ਆਇ ਤਨ ਸਰਬੀ ਚਿੰਤ ਮਟਵਾਇ ਸਭ ਤੇ ਉਤਨ ਕਥਾ ਨਾਮ ਸੁਣਤ ਦਰਬੁ ਲਖਾ ਮੋ ਕਉ ਤੇਰਾ ਸਾਸਤ ਸੁਖਾਟ ਪੈਗਿਰਨ ਚੜ ਜਾਇ ਹੰਦ ਲਖਾ ਬਧਰੋ ਸੁਮਾਨ ਜੋ ਖੋਦ ਕਿਰਪਾ ਕਰਾਵੇ ਮੋਹ ਮਨ ਸਤਿ ਮਹਮੰਦ ਤੇ ਰਾਵਰੀ ਹਨ ਸਤਿ ਕਰ ਸਤਿ ਤੁਮਰੀ ਆਬਲੇ ਹੋ ਤੈ ਸਤਾ ਸੁਦਾਵਰੀ ਧਰਮ ਸਨਮਾਨ ਜੋ ਗੁਰੂ ਗੁਰੂ ਖਾਲਸਾ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਹਾਨੂੰ ਸਤਗੁਰੂ ਸੇਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਤੋਂ ਲੈ ਕੇ ਦਸਮ ਪਾਤਿ ਸ਼ਾਤ ਅੰਤਮ ਸਤਪੁਰੂਸ਼ੀ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੱਕ ਦਸਾਂ ਸਤਿਗੁਰਾਂ ਨੇ ਨਿਰਗੁਣ ਤੋਂ ਸਰਗੁਣ ਰੂਪ ਦੇ ਵਿੱਚ ਵਰਤ ਕਰਕੇ ਇਸ ਲੋਕ ਦੇ ਜੀਵਨ ਦਾ ਆਧਾਰ ਕੀਤਾ ਅਤੇ ਸਤਿਗੁਰਾਂ ਨੇ ਸਮੂਤੀ ਬੁਕਾਈ ਨੂੰ ਆਪਣੀ ਪਾਵਨ ਕੋਈ ਤਰ ਦੁਆਰਾ ਹੀ ਉਪਦੇਸ਼ ਦੇ ਕੇ ਸਰਬੱਤ ਦੇ ਜੀਵਾਂ ਦਾ ਭਲਾ ਕਰਦਿਆਂ ਸਤਗੁਰੂ ਮਹਾਰਾਜ ਜੀ ਨੇ ਸੰਸ ਤੇ ਮਹਾਨ ਪਰਉਪਕਾਰ ਕੀਤੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੁਰਬਾਨੀ ਦੁਆਰਾ ਹੀ ਨੁਖ ਜੀਵਾਂ ਨੂੰ ਆਪਣਨ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਕੇ ਸਰਬਤਰ ਜੀਵਾਂ ਦੇ ਉੱਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕਰਦਿਆਂ ਜਮਨ ਮਰੁੰਦਾ ਬਿਹੜਾ ਛੱਟ ਕੇ ਨੁਖਾ ਜੀਵਨ ਦੀ ਸਫਲਤਾ ਦੀ ਗੁਰ ਸਥਿਤੀ ਕੀਤੀ ਹੈ। ਔਰ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਨੀ ਦੀ ਮਹਾਨਤਾ ਨੂੰ ਦਰਸਾਉਂਦਿਆਂ ਹੋਇਆਂ ਤੁਰ ਕੀ ਬਾਣੀ ਆਈ ਤੈਨ ਸਭੀ ਚਿੰਤ ਮਟਾਈ ਹੋਰ ਇਸ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਦੇ ਸਤਾਰੇ ਇਸ ਤੋਂ ਨਵਾ ਹਜੂਰ ਕਲੀਬ ਨੂੰ ਜੀ ਨੇ ਵਾਹ ਵਾਹ ਬਾਣੀ ਨਿਰੰਕਾਰ ਹੈ ਇਸ ਜੀਵ ਨੂੰ ਅਵਰਣ ਇਸਾਰ ਗੁਰਬਾਣੀ ਦਾ ही ਸਤਿਗੁਰੂ ਮਹਾਰਾਜ ਜੀ ने ਲੰਮਾ ਗੁਰਬਾਣੀ ਦੀ ਧਰਮ ਕਰਦਿਆਂ ਗੁਰਬਾਣੀ ਦੀ ਮਹਾਨਤਾ ਧਰਮਸ਼ੀਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੁਆਰਾ ਸੰਪੂਰਨ ਦਰਸਾਈ ਹੈ। ਔਰ ਦਸੋਂ ਪਾਤਸ਼ਾਹਿਆਂ ਨੇ ਉਹ ਪਾਵਨ ਪਵਿੱਤਰ ਗੁਰਬਾਣੀ ਦਾ ਖਦਾਨਾ ਆਪਣੀ ਗੁਰਸਿੱਖਾਂ ਨੇ ਜਿਸ ਨੂੰ ਇਤਾਰਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਬਾਅਦ ਇਸ ਮਾਤ ਲੋਕ ਦੇ ਉੱਤੇ ਚੌਥੇ ਪਾਤਸ਼ਾਹ ਜੀ ਦੇ ਸਮੇਂ ਗੁਰਬਾਣੀ ਦੇ ਵਿੱਚ ਕੋਡ ਮਨਤੀ ਔਰ ਗੁਰੂ ਪਰਦੇਨੰਦਕਾ ਨੇ ਗੁਰਬਾਣੀ ਦੇ ਵਿੱਚ ਮਿਲਾਪਟ ਕਰਕੇ अपनी काव ਦੇ ਵਿੱਚ ਤੁਹਾਨੂੰ ਸਰਪ੍ਰੀਖ ਗੁਰੂ ਨਾਨਕ ਦੇਵ ਸਰ ਮਹਾਰਾਜ ਜੀ ਦਾ नाम ਨਾਮ करके ਕਰਕੇ ਗੁਰਬਾਣੀ ਪ੍ਰਤੀ ਭਲੇਖੇ ਸ਼ੰਕੇ ਅਤੇ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੰਚਮ ਪੌਸਟਾ ਪਰਮ ਸਰਪ੍ਰੀਖ ਗੁਰੂ ਅਰਜਨ ਦੇਵ संसार ਜੀ ਨੇ ਸੰਸਾਰ ਤੇ ਪਰਉਕਾਰ ਕਰਨ ਵਾਸਤੇ ਆਦਰਵਦੀ ਕੁਲ ਸਮੋਰਨ ਸੋਕ ਬਤਰੀ ਹੋ 1604 ਇਸਵੀ ਨੂੰ ਆਪ ਜੀ ਨੇ ਪਹਿਲੇ ਸਤਿਗੁਰਾਂ ਦੀ ਸਮੂਹ ਕੀ ਗੁਰਬਾਣੀ ਦਾ ਖਜ਼ਾਨਾ ਪੱਥਰ ਕੜ ਕੇ ਗੁਰਦੁਆਰਾ ਸਾਹਿਬ ਪਵਨ ਧਰਤੀ ਸ੍ਰੀ ਹਰਿਮੰਤ ਸਰਸਾਉਂ ਜੀ ਦੀ ਪਵਿੱਤਰ ਧਰਤੀ ਤੇ ਸਾਰੀ ਗੁਰਬਾਣੀ ਦਾ ਸਰੂਪ ਸਤਿਗੁਰੂ ਮਹਾਰਾਜ ਜੋ ਭਾਈ ਗੁਰਦਾਸ ਜੀ ਨੇ ਲਿਖਾਰੀ ਰੱਖ ਕਰਕੇ ਪਾਵਨ ਪ੍ਰੋਕਟਰ ਸਰੂਪ ਲਖਣ ਦੀ ਸੇਵਾ ਬਲਿਗੁਆਈ ਵਿੱਚ ਕਰਵਾਈ। ਔਰ ਵਾਈਸਾ ਪਾਇੰਦਰਾਸ ਜੀ ਨੇ ਸਤਗੁਰੂ ਜੀ ਦੀ ਹਾਉਕਾ ਵਿੱਚ ਸਤਗੁਰਾਂ ਦੀ ਪਵਨ ਧੰਗੂ ਨਾਮ ਰਚਨਾ ਕੀਤੇ ਤੇ ਪੰਚੀ ਪਾਠ ਸਰਵਿਤ ਉਹ ਸਾਰੀ ਗੁਰਬਾਣੀ ਸਤਗੁਰਾਂ ਦੇ ਸੋਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੰਕਤ ਕੀਤੀ। ਔਰ ਉਸ ਤੋਂ ਬਾਅਦ ਸਤਗੁਰਾਂ ਨੇ ਤੇ ਵੀਡ संपूर्ण करके जिस विद 30 राजसन और नौने बादशाह जी दी दीबानी को बेला बाकी सतगुरु महाराज जी ने तकरीबन और गुरुवाणी सारी की कथा पतर करके भीड़ कर्णशिव प्रोग्राम साहब जी दी, दी, दी तैयार करके श्री अनर्थ सर साहब जी के प्रसिद्ध हिंदुस्तान के पावन स्थान पे ਸਤਿਗੁਰੂ ਨੇ ਇਸ ਨੂੰ ਉੱਤਾਰ ਪ੍ਰਕਾਸ਼ ਕੀਤਾ ਔਰ ਉਸ ਤੋਂ ਬਾਅਦ ਦਸਮ ਪਤਮ ਸ੍ਰੀ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੂਰਾ 102 ਸਾਲ 2 ਸਾਲ 102 ਸਾਲ ਤੋਂ ਬਾਅਦ ਸੰਨਤ 1763 ਵਿਕਰਮੀ ਨੂੰ ਸਤਨ ਸੰਨਤ 1762 ਵਿਕਰਮੀ ਕੱਤਕ ਸੁਦੀ ਪੂਰਨ और सतारा ईस्वी में संघों ने विनती करने पर तब श्री दमन शाह जी की, की तलवंडी उस पावन पवित्र स्थान के सतगुरुओं ने कान्हा श्री रघुराम शाह जी के पावन पवित्र स्वरूप अपनी रचनाओं कंठों चढ़न कीते ਔਰ ਅਮਰ ਸਹੀ ਜੀ ਫਾਈ ਮਨ ਸਿੰਘ ਜੀ ਔਰ ਬਾਬਾ ਦੀਪ ਸਿੰਘ ਜੀ ਨੇ ਲਖਾਰੀ ਲਾ ਕੇ ਸਤਪੁਰਾਂ ਨੇ ਉਹ ਸਾਰਾ ਸੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰਪਾਰ 1062 ਬਿਕਰਮੀ 1705 ਈਸਵੀ ਅੱਤਕ ਸੁਧੀ ਪੂਰਨ ਮਾਸਿਤ ਉਰੰਭ ਕਰਕੇ 1763 ਬਿਕਰਮੀ 1730 ਈਸਵੀ 23 ਸਾਵਣ ਵਾਲੀ ਦਿਹਾੜੇ ਉੱਤ ਕਰੀਬਨ 9 ਦੇ ਅੰਦਰ ਅੰਦਰ नौ महीने नौ कड़ियां नौ कलाओं के संदेह के अंदर कमन श्री गुरु राम साहिब जी का स्वरूप संपूर्णन विखलाब करके सतगुरु जी ने वो सारी गुरबानी ओंकार से लेकर 18 10 20 तक कक्ष जी दमन राव साहब साऊ की तलवंडी बैठे सतगुरु जी ने स्वरूप दी संपूर्णताएं की थी अमृत वेदूर गुरबानी ਰਸਨਾ ਤੋਂ ਕੰਕ ਨੂੰ ਉਚਾਰਦੇ ਔਰ ਸ਼ਾਮ ਨੂੰ ਉਸੇ ਕੁਰਬਾਨੀ ਦੀ ਕਥਾ ਸ੍ਰੋਤੇ ਖਾਲਸੇ ਨੂੰ ਆਪਣੀ ਰਸਨਾ ਕੋ ਸਰਵੰਨ ਕਰਵਾਉਂਦੇ ਜੀਨ 48 ਸਿੰਘਾਂ ਨੇ ਸਤਿਗੁਰੂ ਜੀ ਦੀ ਰਸਨਾ ਤੋਂ ਉਹ ਪਾਵਨ ਗੁਰੂਤਰ ਗੁਰਬਾਨੀ ਦੀ ਕਥਾ ਆਪ ਇਕ ਓੰਕਾਰ ਤੋਂ ਲੈ ਕੇ 18 10 20 ਤੱਕ ਸਰਵੰਨ ਕੀਤੀ ਕਥਾ ਦੀ ਸਮਾਪਤੀ ਤੇ ਸਾਰੇ ਹੀ ਗੁਰੂ ਕੇ ਸਿੰਘਾਂ ਨੇ ਜੀਵਨ ਮੁਕਤ ਅਤੇ ਦੇਹ ਮੁਕਤ اے برہم دیو اور মহান दाता মহান بخششا سر گرو مہاراجی دے درون پراپت پتنیان اور حضور نے اسی اس تھان تے کرپا کر کے ਗੁਰੂ ਦੀ ਉਸ ਨੂੰ ਦੀ ਨੂੰ ਅਗਿਆ ਕੀਤੀ ਕਿ ਜੋ ਗੁਰਬਾਣੀ ਦੇ ਸ਼ੁੱਧ ਪਾਠ ਅਤੇ ਅਰਥ ਤੁਸੀਂ ਗੁਰੂ ਘਰ ਦੇ ਵਿੱਚੋਂ ਪ੍ਰਾਪਤ ਕੀਤੇ ਹਨ ਕਿ ਖਾਲਸਾ ਪੰਥ ਦੇ ਅੰਦਰ ਪ੍ਰਚਲਿਤ ਰੱਖਣ ਵਾਸਤੇ ਖਾਲਸੇ ਨੂੰ ਗੁਰਸਿੱਖਾਂ ਨੂੰ ਗੁਰਬਾਣੀ ਦਾ ਸ਼ੁੱਧ ਪਾਠ ਤੇ 1700 ਤੋਂ ਅੰਦਰ ਸਥਾਪਿਤ ਕੀਤੀ ਜਾਂਦੀ ਹੈ 1760 ਵਿੱਚ ਔਰ 1763 ਵਿਕਰਮ ਜੀ ਨੂੰ ਸਤਿਗੁਰੂ ਜੀ ਨੇ ਇਸ ਗੰਦਮਨੀ ਤਕਸਾਲ ਜੱਥੇ ਬੰਦੀ ਦੀ ਸਥਾਪਨਾ ਆਪ ਆਪਣੀ ਅਗਵਾਈ ਦੇ ਕੀਤੀ ਔਰ ਇਸ ਤੋਂ ਅੰਦਰਨੀ ਦੇ ਪਹਿਲੇ ਮੁਖੀ ਅਮਰ ਸਿੰਘ ਬਾਬਾ ਦੀਪ ਸਿੰਘ ਜੀ ਨੇ ਥਾਪਿਆ ਔਰ अमर शहीद बाबा दीप ਸਿੰਘ जी ਤੋਂ ਲੈ अमर शहीद बाबा मनी ਮਨੀ जी ਜੀ तक, ਤੱਕ ਸਤਿਗੁਰਾਂ ਦੀ ਆਗਿਆ ਦਾ ਪਾਲਨ ਕਰਦੇ ਹੋਏ ਮਹਾਂਪੁਰਖ ਬ੍ਰਹਮ ਗਿਆਨੀ ਗੁਰਸਿੱਖ ਆਪਣੇ ਸਮੇਂ ਦੌਰਾਨ ਖਾਲਸੇ ਨੂੰ ਗੁਰਮਾਰਗ ਦੇ ਸੁੱਧ ਪਾਠ ਅਤੇ ਅਰਥ ਸਰਬਨ ਕਰਵਾਉਂਦੇ ਰਹੇ ਸੁੱਧ ਪਾਠ ਪੜ੍ਹਾਉਂਦੇ ਰਹੇ ਅਤੇ ਅਰਥ ਸਿੰਘਾਂ ਨੂੰ ਸਿਰਿ ਹਰ ਮੰਦਰ ਸਾਹਿਬ ਦੀ ਗਏ ਪਾਵਨ ਸਤਕਾਰ ਵਾਸਤੇ ਦਮਦਮਾ ਟਕਸਾਲ ਦੇ ਪਹਿਲੇ ਮੁ끼 ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਅਬਦਾਲੀ ਜੀ ਫੌਜਾਂ ਦੇ ਨਾਲ ਫੈਦਾਨੇ ਰੰਗ ਦੇ ਵਿੱਚ ਡੁੱਝਦੇ ਆਪਣਾ ਧੜ ਸੀਸ ਵੱਖਰਾ ਹੋ ਜਾਣ ਦੇ ਬਾਵਜੂਦ ਖੱਬੇ ਹੱਥ ਦੀ ਕਾਲੀ ਉੱਤੇ ਸੀਸ ਰੱਖ ਕੇ ਸੱਜੀ ਹੱਥ ਵਿੱਚ ਖੰਡਾ ਫੜ ਕੇ ਜਾਨ ਨੂੰ ਅਨੌਸਰ ਕਰਦੇ ਨਗਰੀਆ ਸਾਹਨੇ ਕੋਰ ਨੂੰ ਪੈਂਡੋ ਉਤੇ ਆਪਣੇ ਚਰਨਾਂ ਨਾਲ ਤੈਅ ਕਰਕੇ ਆਪਣਾ ਸ੍ਰੀ ਹਰਮੰਦਰ ਸਾਹਿਬ ਸਰੋਵਰ ਦੀਆਂ ਪਰਕਰਮਾਂ ਵਿੱਚ ਲਿਆ ਕੇ ਬਾਬਾ ਜੀ ਦੇ ਦੇਸ਼ ਨੂੰ ਚਾਲੇ ਪਾ ਕੇ ਮਹਾਨ ਸ਼ਹੀਦੀ ਪ੍ਰਾਪਤੀ ਹੋਰ ਇਸੇ ਤਰ੍ਹਾਂ ਹਰਮੰਦਰ ਸਾਹਿਬ ਜੀ ਦੇ ਅਨੁਸਾਰ ਲਈ ਅਨਰਸ਼ਹੀ ਭਾਈ ਮਨੂ ਸਿੰਘ ਜਿਨੇ ਆਪਣਾ ਬਲਬਲ ਕਤਵਾ ਕੇ ਕਰਨ ਦੀ ਖਾਤਰ ਆਪਣਾ ਆਪ ਕੁਰਬਾਨਨ ਕੀਤਾ ਉਸ ਸਮੇਂ ਤੋਂ ਲੈ ਕੇ ਇਸ ਦੰਦਨੀ ਟਕਸਾਲ ਦੇ ਦੂਸਰੇ ਮੁਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਐ ਬਾਬਾ ਦੀਪ ਸਿੰਘ ਜੀ ਤੋਂ ਬਾਅਦ ਦੰਦਨੀ ਟਕਸਾਲ ਦੇ ਦੂਸਰੇ ਮੁਖੀ ਅਮਰ ਸ਼ਹੀਦ ਬਾਬਾ ਬਖਸ਼ ਸਿੰਘ ਜੀ ਜਿਨ੍ਹਾਂ ਦਾ ਸ਼ਹੀਦ ਸ਼ਹੀਦ ਗੁੰਗਾ ਸ਼੍ਰੀ ਅਕਾਲ ਤਖਸਾਲ ਜੀ ਦੇ ਮਗਰ ਸੁਭਾਈ ਭਾਈਵਾਨ ਹੈ ਇੱਥੇ ਆਪਜੀ ਅਦਾਲੀ ਦੀਆਂ 3000 ਫੌਜਾਂ ਦੇ ਨਾਲ 2001 ਖਾਮਦੂ ਅਫਗਾਨੀ ਦਾ ਜਰਨੈਲ ਸੀ ਉਹਨਾਂ ਫੌਜਾਂ ਦੇ ਨਾਲ ਕੇਵਲ 30 ਸੰਘਾਂ ਦੇ ਸਹਿਤ ਮੁਕਾਬਲਾ ਕਰਦੇ ਹੋਏ ਆਪ ਤੋਂ ਧੜ ਨਾਲ ਮੈਦਾਨੇ ਜੰਗ ਦੇ ਵਿੱਚ ਜੂਝਦੇ ਮਹਾਨ ਕੁਰਬਾਨੀ ਦਿੱਤੀ ਔਰ ਬਾਬਾ ਬਲਵਕਸਨ ਵੀ ਤਖਤ ਸ੍ਰੀ ਕੇਸਰ ਸਾਹਿਬ ਜੀ ਦੇ ਜਥੇਦਾਰ ਵੀ ਰਹੇ ਔਰ ਉੱਥੇ ਹੀ ਆਪ ਜੀ ਫੈਦਲ ਚਰਨੀ ਤੁਰ ਕੇ ਤਰਮੰਦਰ ਸਾਹਿਬ ਦੀ ਅਦੁੱਸ਼ਤ ਕਾੜ ਲਈ ਆ ਕੇ ਹਰਮੰਦਰ ਸਾਹਿਬ ਵਿਖੇ ਉਹਨਾਂ ਮਹਾਨ ਮਹਤੋਖਾਂ ਨੇ ਕੁਰਬਾਨੀ ਦਿੱਤੀ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਤੋਂ ਬਾਅਦ ਇਸ ਗੰਧਮਨ ਟਕਸਾਲ ਦੇ ਤੀਸਰੇ ਮੁਖੀ ਮਹਾਂਪੁਰਖ ਬ੍ਰਹਮ ਗਿਆਨੀ ਬਾਬਾ ਸੂਰਤ ਸਿੰਘ ਜੀ ਔਰ ਉਹਨਾਂ ਤੋਂ ਬਾਅਦ ਮਹਾਂਪੁਰਖ ਬਾਬਾ ਗੁਰਦਾਸ ਸਿੰਘ ਜੀ ਔਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਖਟਗ੍ਰੰਤੀ ਮਹੰਬਰੂ ਫਿਆਨਿ ਸੰਤਸੰਘ ਦੀ ਜੀ ਨੇ ਬਹੁਤ ਲੰਮਾ ਸਮਾਂ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਦੀ ਮਹਾਨ ਸੇਵਾ ਕੀਤੀ ਔਰ ਦੰਦਮਨ ਟਕਸਾਲ ਦੇ ਨੋਕੀ ਰਹੇ ਕੇ ਬਿਆਨ ਸਿੰਘਾ ਨੇ ਗੁਰਬਾਣੀ ਦੇ ਸ਼ੁੱਧ ਪਾਠ ਅਤੇ ਅਰਥ ਆਪਣੇ ਦਰਸ਼ਨਾਂ ਤੋਂ ਸਰਵਨ ਕਰਵਾਏ ਔਰ ਉਹਨਾਂ ਤੋਂ ਬਾਅਦ ਬਾਬਾ ਸੰਤਸੰਘ ਜੀ ਜੋ ਦੰਦਮਨ ਟਕਸਾਲ ਦੇ ਛੇਵੇਂ ਮੁਕਤੀ ਨਾਹਿਰបុਖਸਨ ਉਨ੍ਹਾਂ ਤੋਂ ਬਾਅਦ ਇਸ ਮੰਦਨੀ ਟਕਸਾਲ ਦੇ ਮੁਖੀ ਆਹਾ ਪੁਰਖ ਸੰਤ ਬਾਬਾ ਦਇਆ ਸਿੰਘ ਜੀ ਔਰ ਉਨ੍ਹਾਂ ਤੋਂ ਬਾਅਦ ਸੰਤ ਗਿਆਨੀ ਪ੍ਰਭਾਨ ਸਿੰਘ ਜੀ ਜਿਨ੍ਹਾਂ ਨੇ ਬੇਅੰਤ ਸੰਗਤਾਂ ਨੂੰ ਗੁਰਬਾਣੀ ਦੇ ਅਤਿ ਸ਼ੁੱਧ ਪਾਠ ਦੀ ਸੰਪਰਦਾ ਦੇ ਨਾਲ-ਨਾਲ ਆਪ ਜੀ ਨੇ ਗੁਰਬਾਣੀ ਦੇ ਟੀਕੇ ਵਿਆਖਿਆ ਰੂਪ ਦੇ ਵਿੱਚ ਸੰਗਤਾਂ ਦੇ ਵਿੱਚ ਵਿਖਤੀ ਰੂਪ ਦੇ ਵਿੱਚ ਪ੍ਰਚਲਿਤ ਕੀਤੇ ਉਹਨਾਂ ਤੂਬਾਰ ਸੰਤ ਬਾਬਾ ਹਰਨਾਮਨ ਸਿੰਘ ਜੀ ਬਿੰਦੀ ਔਰ ਉਹਨਾਂ ਤੂਬਾਰ ਮਹਾਂ ਤੁਰਕ ਬ੍ਰਹਮ ਗਿਆਨੀ ਸੰਤ ਬਾਬਾ ਵਿਸ਼ਨ ਸਿੰਘ ਜੀ ਮਰਾਲੇ ਵਾਲੇ ਇਹਨਾਂ ਵਾਹਿਗੁਰੂ ਤੋਂ ਬਾਅਦ ਇਸ ਦੰਦਨੀ ਟਕਸਾਲ ਦੇ 11ਵੇਂ ਦਸਤਾਰ ਅੰਤਰ ਰਤਨ ਬ੍ਰਹਮ ਗਿਆਨੀ ਸੰਤ ਬਾਬਾ ਸੰਦਰ ਸਿੰਘ ਜੀ ਪੰਡਰਾ ਵਾਲੇ ਹੋਏ ਦਸਵਾਵੇਂ ਮੁਖੀ ਮਹਾਂ ਬ੍ਰਹਮ ਗਿਆਨੀ ਸੰਤ ਬਾਬਾ ਵਿਸ਼ਨ ਸਿੰਘ ਜੀ ਮਰਾਲੇ ਵਾਲੇ ਹੋਏ ਜਿਨ੍ਹਾਂ ਨੇ ਆਪਣੇ ਜੀਵਨ ਦੌਰਾਨ ਬਿਆਨਤ ਸੰਧਾਨ ਨੂੰ ਗੁਰਬਾਰਨ ਦੇਖੂ ਤੋਂ ਪਾਠ ਅਤੇ ਅਰਥ ਸਰਵਣ ਕਰਵਾਏ ਔਰ ਬਿਆਨਤ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਔਰ 23 ਘੰਟੇ ਲਗਾਤਾਰ ਨਾਮ ਸਿਮਰਨ ਦੀ ਰਣ ਥੱਕ ਘੱਲਣੋਂ ਘਾਬੀ ਉਹਨਾ ਮਹਾਂਪੁਰਖਾਂ ਤੋਂ ਪ੍ਰੰਗ ਗਨਦਮੇ ਟਕਸਾਲ ਦੇ 11ਵੇਂ ਲੋਕੀ ਪੰਥ ਰਤਨ ਸੱਖਣ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਸੁਦਰਸ਼ਨ ਜੀ ਖਾਲਸਾ ਪੰਡਰਾਂ ਵਾਲੇ ਮਹਾਂਪੁਰਖ ਹੋਏ ਜਿਨ੍ਹਾਂ ਨੇ अपने ਜੀਵਨ ਦੀ ਯਾਤਰਾ ਦੌਰਾਨ ਧਰਮਸ਼ੀਲ श्री गुरु ਸਾਹ ਮਹਾਰਾਜ ਜੀ ਦੀਆਂ 21 ਕਥਾ ਸੰਤਮਨਾਂ ਔਰ ਵਿਦਿਆਰਥੀਆਂ ਨੂੰ ਆਪਣੀ ਪਾਵਨ ਦਸਨੋਂ ਸਰਵਨ ਪ੍ਰਵਾਨੀਆਂ 5 ਲੱਖ ਪ੍ਰਾਣੀਆਂ ਨੂੰ ਖੰਡੇ ਪਾਟੇ ਦਾ ਅੰਨਿਕ ਸ਼ਕਾਇਆ ਔਰ ਇਸੇ ਹੀ ਤਰ੍ਹਾਂ 1300 ਸਿੰਘ ਉਹਨਾਂ ਨੇ ਗੁਰੂ ਘਰ ਅੰਦਰ ਗੁਰਮੁਖੀ ਪ੍ਰਚਾਰਕ ਅਖੰਡ ਪਾਠੀ ਕਥਾਵਾਚ ਦਾ ਫਾਇਦਾ ਕੀਤੇ ਔਰ ਉਹਨਾਂ ਦੇ ਪਾਸੋਂ 1000 ਸੁੱਧ ਅਖੰਡ ਪਾਠੀ 100 ਕਥਾਵਾਚ 100 ਪ੍ਰਚਾਰ ਕਰਨ ਵਾਲੇ ਪ੍ਰਚਾਰਕ ਔਰ 200 ਕਥਾਵਾਚ ਉਹਨਾਂ ਨੇ ਖਾਲਸਾ ਫੰਦ ਲਈ ਆਪ ਤਿਆਰ ਕਰਕੇ ਕਾਨੂੰ ਦੀ ਸੇਵਾ ਲਈ ਹਾਜ਼ਰ ਕੀਤੇ ਔਰ ਉਹਨਾਂ ਮਹਾਂਪੁਰਖਾਂ ਤੋਂ ਬਰੋਸਾਇ ਹੋਏ ਧਰਮਿਕ ਨਿਕਸ਼ਾਲ ਦੇ ਬਾਦਮੇ ਮੁਖੀ 60 ਕਰਨ ਵਾਸੀ ਮਹਾਂਪੁਰ ਹਰਿਧਿਆਮਰਤਨ ਸੰਤਪਾਪਾ ਗੁਰਬਚਨ ਸਿੰਘ ਦੀ ਖਾਲਸਾ 15 ਵਾਲੇ ਜਿਨ੍ਹਾਂ ਨੇ ਇਸ ਜਥੇਬੰਦੀ ਦੀ ਆਪਣੇ ਜੀਵਨ ਦੌਰਾਨ ਬਹੁਤ ਵੱਡੀ ਸੇਵਾ ਕੀਤੀ ਔਰ 28 ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਥਾਵਾਂ ਨੂੰ ਆਪਣੀ ਰਚਨਾ ਤੋਂ ਸਿੰਘਾਉਂ ਅਤੇ ਸੰਕਰਨ ਸਰਵਨ ਕਰਵਾਈਆਂ और ਲੱਖਾਂ ਪ੍ਰਾਣੀਆਂ ਨੂੰ गुरु ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰ ਨਾਲ ਜੋੜਿਆ ਗੁਰੂ ਘਰ ਨਾਲ ਜੋੜਿਆ ਲੱਖਾਂ ਪ੍ਰਾਣੀਆਂ ਦੇ ਮਨਸ਼ੇ ਛਡਾਏ ਲੱਖਾਂ ਪ੍ਰਾਣੀਆਂ ਨੂੰ ਮਨਮਤ ਨਾਲ ਰੋਕੇ ਮਨਮਤ ਤੋਂ ਕੁਰਾਹੇ ਪਿਆ ਹੋਣਾਂ ਨੂੰ ਜਾਣ ਤੋਂ ਰੋਕੇ ਗੁਰਮਤ ਦੇ ਗਾਢੀ ਮਾਰੂ ਉਤੇ ਤੋਰਨ ਲਈ ਉਹਨਾਂ ਸੰਦੋਸਤਾਨ ਦੇ ਕੋਨੇ-ਕੋਨੇ ਵਿੱਚ ਵਿਚਰ ਕੇ ਉਹਨਾਂ ਨੇ ਗੁਰਮਤਿ ਸਿੱਖੀ ਦਾ ਬਹੁਤ ਵੱਡਾ ਪ੍ਰਚਾਰ ਕੀਤਾ ਉਹਨਾਂ ਪਰ ਮਹਾਂਪੁਰਖਾਂ ਤੋਂ ਬਾਅਦ ਇਸ ਦਮਦਮੇ ਤਕਸਾਲ ਦੇ ਫਿਰ ਮੁਖੀ ਮਹਾਂਪੁਰਖ ਸਤਖਨਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਜੀ ਨੇ ਆਪਣੇ 8 ਸਾਲ ਵਿੱਚ ਆਪਣੀ ਮਨ ਦੀ ਲੋਕੀ ਬਹੁਤ ਵੱਡੀ ਕੌਮ ਲਈ ਸੰਸਦੀ ਘਟਨਾ ਸਾਦੀ ਗੁਰੂਆਂ ਤੇ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ ਗੁਰਮਾਰਗ ਦੇ ਸੋਧ ਅਖੰਡ ਪਾਰਟੀ ਅਤੇ ਕਥਾ ਵਾਚ ਪ੍ਰਚਾਰ ਤਿਆਰ ਕਰਕੇ ਪੰਥ ਦੀ ਸੇਵਾ ਲਈ ਹਾਜ਼ਰ ਕੀਤੇ ਇਹਨਾਂ ਮਹਾਂਪੁਰਖਾਂ ਦੇ ਸਤਿਕਾਰ ਕਰਨ ਤੋਂ ਬਾਅਦ ਇਸ ਦੰਦਮਣੀ ਟਕਸਾਲ ਦੇ 14ਵੇਂ ਲੋਕੀ ਮਹਾਨ ਘੜਕ ਕੌਮੀ ਜਰਨੈਲ ਹਰਦੇ ਮੁਜਾਹਿਦ ਸੰਸਪਾਹੀ ਅਮਰ ਸ਼ਹੀਦ ਸੰਬਾਬਾ ਜੱਪਰ ਸਿੰਘ ਦੀ ਖਾਲਸਾ ਪੰਡਰਾਂ ਵਾਲੀ ਐਸਟੀਫੇ ਬੰਦੀ ਦੀ ਮੁਖੀ ਬਣੇ ਇਨਾਂ ਨੇ ਆਪਣੇ ਜੀਵਨ ਦੌਰਾਨ ਲੱਖਾਂ ਪ੍ਰਾਣੀਆਂ ਨੂੰ ਸ੍ਰੀ ਘਰਨਾਲ ਅਤੇ ਗੁਰਮਤਿ ਨਾਲ ਜੋੜਿਆ ਪੂਰੀ ਦੁਨੀਆ ਦੇ ਅੰਦਰ ਸਿੱਖ ਕੌਮ ਦੇ ਔਰ ਖਾਲਸਾਈ ਬੋਲਵਾਲਿਆਂ ਦਾ ਢੰਡਾ ਬਲੰਦ ਕਰਕੇ ਦੁਨੀਆ ਦੇ ਕੋਨੇ-ਕੋਨੇ ਦੇ ਅੰਦਰ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਆਉਣ ਦੇ ਹੱਕਾਂ ਦੀ ਖਾਤਰ ਬਹੁਤ ਵੱਡੀ ਲਾਹਤ ਪੁਰਖਾਂ ਨੇ ਘੱਲਣਾ ਘੱਲਈ ਇਹਨਾਂ ਮਹਾਨ ਦੇ ਸ਼ਹੀਦੀ ਪ੍ਰੇਰਣਾ ਹੁਣ ਉਹ ਮਹਾਂਪੁਰਖਾਂ ਦੇ ਸ਼ਹੀਦੀ ਪ੍ਰਾਪਤ ਕਰਜਾਂਤ ਪਵਤ ਇਸ ਦਰਦਨੀ ਟਕਸਾਲ ਦੇ 15ਵੇਂ ਮੁਕੀ ਨਾਮ ਰਸੀਏ ਸੇਵਾ ਸਿਮਰਨ ਦੇ ਪੰਜ ਪਵਿੱਤਰ ਆਤਮਾ ਮਹਾਂਪੁਰਖ ਸੰਬਾਪਾਠਾਪੁਰ ਸਿੰਘ ਦੀ ਖਾਲਸਾ ਇਸ ਦਰਦਨੀ ਟਕਸਾਲ ਦੇ ਮੁਕੀ ਖਾਪੇ ਗਏ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਆਪਣੇ ਜੀਵਨ ਦੌਰਾਨ 22 ਸਾਲ ਤੋਂ ਉਪਤੇ ਲੰਮਾ ਅਰਸਾ ਵਿਕਰੇ ਤੋਂ ਬਿਖੇ ਸਮਿਆਂ ਵਿੱਚ ਬਹੁਤ ਵੱਡੀ ਸੇਵਾ ਕੀਤੀ ਔਰ ਮਿਆਂ ਦਾ ਪਾਠੀ ਕਥਾਵਾਚਕ ਨੂੰ ਪ੍ਰਚਾਰ ਗੁਰੂ ਘਰ ਲਈ ਪੰਥ ਲਈ ਤਿਆਰ ਕਰਕੇ ਆਉਣ ਨੂੰ ਸਮਰਪਿਤ ਕੀਤੇ ਫਿਰ ਅਕਾਲ ਤੱਕ ਸਾਹਿਬ ਜੀ ਦੀ ਸੇਵਾ ਹੱਥੀਂ ਆਪਣੇ ਹਸਤ ਕਮਲੋਂ ਦੁਆਰਾ ਕਰਵਾਈ ਔਰ ਜੋ ਸੀ ਜੀ ਅਕਾਲ ਤੱਕ ਸਾਹਿਬ ਜੀ ਦੀ ਮਹਾਨ ਉਮਾਰਤ ਜਿਸ ਨੂੰ ਭਾਰਤੀ ਹਕੂਮਤ ਨੇ ਇੱਕ ਨੂੰਤੂ ਲੈ ਕੇ ਛੇ ਸ਼ੇਦੂਨ ਕਪਟੰਕਾ ਤੋਂ ਪਾਵੇ ਗੋਲਿਆਂ ਦੀ ਵਿਚਾਰਡ ਕਰਕੇ ਤਹਿਸ ਨਿਸ਼ ਕੀਤਾ ਔਰ ਲੱਖਾਂ ਸੌ ਸੌਨੀਆਂ ਘਟੀਆਂ ਨੂੰ ਜਾਮਨ ਦਰਵਾਣੇ ਨੇ ਸ਼ਹੀਦ ਕੀਤਾ ਉਹ ਸਿਦਕਾਲਤਾਕ ਸਰੂਜੀ ਦੀ ਬਹਾਦੂਰ ਸੇਵਾਕਾਰ ਸੇਵਾ ਅਨਮਾਰਤ ਅਧਿਕਾਰ ਸੇਵਾ ਮਹਾਂਪੁਰਖ ਸੰਤ ਗਗਠਾ ਦਰਸਨ ਦੀ ਖਾਲਸਾ ਜਿਨੇ ਆਪ ਆਪਣੇ ਹੱਥੀਂ ਕਰਵਾਈ ਔਰ ਇਸ ਤੋਂ ਇਲਾਵਾ ਖਾਲਸਾ ਬੈੱਡਮੀਆ ਔਰ ਖਾਲਸਾ ਹਸਪਤਾਲ ਵਿਦਿਆਕਾਦਾਰੇ ਆਮ ਲਈ ਸਮਾਜ ਦੇ ਭਲੇ ਵਾਸਤੇ ਨਾ ਹੱਥੋਂ ਕੰਮ ਕਰ ਦਿੱਤੇ ਬੇਸ਼ਕ ਬੇਸ਼ਾਮਿਤ ਜਗਤ ਦੇ ਗੁਰਮੁਖ ਜਾਗ ਕਰਕੇ ਗੁਰਮਤਿ ਗੁਰਸਿੱਖੀ ਦਾ ਬੜਾ ਭਾਰੀ ਪ੍ਰਚਾਰ ਕੀਤਾ ਆਪ ਸਮੁੱਚੇ ਖਾਲਸਾ ਪੰਥ ਨੇ ਇਸ ਗੱਲ ਦੀ ਬਹੁਤ ਵੱਡੀ ਖੁਸ਼ੀ ਹੋਏਗੀ ਕਿ ਜੋ ਕਥਾ ਮਹਾਂਪੁਰਖ ਸਤਖੰਵਾਸੀ ਦਵੰਦਬਣੀ ਟਕਸਾਲ ਦੇ ਬਾਰੇ ਮੋਕੀ संत बाबा गुरुबचन सिंह की खालसा पिंढरा वाले ने 27वीं कथा गुरुद्वारा श्री दीखन प्रकाश पिंढर कलां जिला कपूरथला दे विच आप अपनी रचना को प्रारंभ की थी वो कथा महापुरुषों ने सारे सिंघाओं ने अपनी रचना को सर्वगुण करवाने रहे और उनों दी दे सतगुरु महाराज जी ने पैडी बड़ी बख्शीश की थी होई साध जान ਹਮੇਉਂ ਜਮਤ ਤਾਂ ਗੁਰਬਾਣੀ ਦੇ ਇਸ ਮਹਾਂਵਾਕ ਅਨੁਸਾਰ ਜਦੋਂ ਉਹ ਸਤਿਪੁਰਸ਼ ਮਹਾਂਪੁਰੂਖਾ ਕਥਾ ਕਰਦੇ ਸਾਰੇਆਂ ਦੇ ਮਨ ਦੀਆਂ ਗਰਤੀਆਂ ਗੁਰਬਾਣੀ ਦੇ ਸ਼ਬਦ ਦੇ ਨਾਲ ਜੁੜ ਕੇ ਅੰਤਰਮੁਖ ਹੋ ਕਰਕੇ ਅਕਾਗਰ ਚਿਤ ਹੋ ਕੇ ਗੁਰੂ ਦੇ ਸ਼ਬਦ ਵਿੱਚ ਮਿਲਗੁਣ ਹੋ ਜਾ ਕਰਦੀਆਂ ਸਨ ਉਹਨਾਂ ਮਹਾਂਪੁਰਖਾਂ ਨੇ ਬਹੁਤ ਵੱਡਾ ਪਰਉਕਾਰ ਕੀਤਾ ਜਿਸ ਸਮੇਂ ਉਹ ਮਹਾਂਪੁਰਖਾ ਕਥਾ ਕਰ ਰਹੇ ਸਨ ਆਪ ਜੀ ਨੂੰ ਮਹਾਂਪੁਰਖ ਸੰਗਤਵਾਘਰ ਕਰਤਾਰ ਸਿੰਘ ਦੀ ਖਾਲਸਾ ਪੰਡਰਾਂ ਵਾਲਿਆਂ ਨੇ ਅਤੇ ਹੋਰ ਲੋਕਾਂ ਨੂੰ ਦੇ ਸ਼ਾਨੀ ਸਿੰਘਾਂ ਨੇ ਬੇਨਤੀ ਕੀਤੀ ਕਿ ਆਪ ਜੀ ਦੀ ਰਚਨਾ ਦੁਆਰਾ ਜੋ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਹੈ ਇਸ ਨੂੰ ਇੱਕ ਰਿਕਾਰਡ ਕਰਵਾ ਕੇ ਸਮਤਾਂ ਦੇ ਵਿੱਚ ਪ੍ਰਚਾਰਿਆ ਜਾ ਸਕੇ ਹਾਣ ਵਾਲੇ ਸਮੇਂ ਅੰਦਰ ਪ੍ਰਚਲਿਤ ਕੀਤਾ ਜਾ ਸਕੇ ਮਹਾਂਪੁਰਖਾਂ ਨੇ ਸੰਗਤਾਂ ਦੀ ਬੇਨਤੀ ਨੂੰ ਮੰਨਦੇ ਹੋਏ 1967 ਦੇ ਅੰਦਰ ਕੇ 27ਵੀਂ ਕਥਾ ਆਪ ਆਪਣੀ ਰਚਨਾ ਉਪਰੰਤ ਕੀਤੀ ਜੋ ਤਕਰੀਬਨ 1967 ਤੱਕ ਇਹ ਗੁਰਬਾਣੀ ਦੀ ਕਥਾ ਨਿਰੰਤਰ ਚੱਲੀ ਰਹੀ ਔਰ 15 ਫਰਵਰੀ 26 ਮਾਰਗ ਦਿਨ ਬੁੱਧਵਾਰ ਨੂੰ 1967 ਨੂੰ ਕੇ ਸੁਭਾਗੇ ਦਿਹਾੜਿਆਂ ਤੇ ਖਾਲਸਾ ਪੰਥ ਦੇ ਪੰਜਵੇਂ ਤਖਤ ਤਖਤਸੈਖਣ ਸਿੰਘ ਜੀ ਹضور ਸਾਹਿਬ ਦੀ ਵਿਖੇ ਇਹ ਕਥਾ ਮਹਾਂਪੁਰਖਾਂ ਨੇ ਆਪਣੀ ਰਚਨਾ ਤੋਂ ਆਪ ਤਖਤ ਸ੍ਰੀ ਹਜ਼ੂਰ ਸਾਹਿਬ ਜੀ ਦੇ ਕੇ ਸੰਪੂਰਨ ਕਰਦੇ ਇਸ ਕਥਾ ਦਾ ਕੋਪ ਤੋ ਔਰ ਉਸੇ ਬਹੁਤ ਵੱਡੇ ਕਾਚੀ ਦੇ ਮਹਾਂਪੁਰਖਾਂ ਨੇ ਸੰਤਾਨ ਇਸ ਗੁਰਬਾਣੀ ਦੀ ਕਥਾ ਨੂੰ ਆਪਣੀ ਰਚਨਾ ਤੋਂ ਸਰਵਣ ਕਰਵਾ ਕੇ ਸੰਪੂਰਨਤਾ ਦਿੱਤੀ ਹੈ ਔਰ ਮਹਾਂਪੁਰਖਾਂ ਨੇ ਇਹ ਕਥਾ ਜੋ ਕਥਾ ਅੱਜ ਸਮੁੱਚੇ खालसा ਪੰਥ ਦੀ हाजरी अंदर ਤਖਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਵਰਤਾ ਗਤੀ ਗੁਰਪੁਰਬ ਦੇ ਸामੇ ਸਤਿਗੁਰੂ ਮਹਾਰਾਜੀ ਦੇ ਪਾਵਨ ਤੌਰ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਰਲੀਜ ਕੀਤੀ ਜਾ ਰਹੀ ਹੈ ਇਸ ਕਥਾ ਦੀ ਸੇਵਾ ਸੰਭਾਲ ਕਰਦੇ ਆ ਮਹਾਪੁਰਖ ਸੰਤ ਬਾਬਾ ਕਰਤਾਰ ਸਿੰਘ ਦੀ ਖਾਲਸਾ ਮਹਾਪੁਰਖ ਸੰਤ ਬਾਬਾ ਲਖਾਇ ਸਿੰਘ ਦੀ ਖਾਲਸਾ ਔਰ ਮਹਾਂਪੁਰਖ ਸੰਤ ਮੌਲਾ ਖਾਨ ਉਸਮਾਨ ਦੀ ਖਾਲਸਾ ਜੀ ਨੇ ਬਹੁਤ ਵੱਡੀ ਕਹਾਣਾਂ ਕਾਢੀ ਔਰ ਇਸ ਕਥਾ ਨੂੰ ਬਹੁਤ ਸੰਭ ਸੰਭ ਕੇ ਰੱਖੇ ਕੁਝ ਕਥਾ ਮਹਾਂਪੁਰਸ਼ਾਂ ਦੀ ਰਸਨਾ ਦੀ ਔਰ ਇਨ ਸਾਰੇ ਮਹਾਂਪੁਰਸ਼ਾਂ ਦੀ ਰਸਨਾ ਦੀ ਕਥਾ 6 ਜੂਨ 1984 ਦੇ ਕਾਨੂੰ ਦੇ ਅੰਦਰ ਭਾਰਤ ਸਰਕਾਰ ਦੀ ਫੌਜ ਜਿਨ੍ਹਾਂ ਦੇ ਹੱਥੋਂ ਕਥਾ ਦੀਆਂ ਕਾਇਸਤ ਲੱਗੀਆਂ ਉਹ ਇਸ ਅਮੋਲਕ ਖਜ਼ਾਨੇ ਨੂੰ ਆਪਣੇ ਪਾਸ ਚੁੱਕ ਕੇ ਲਏ ਗਏ ਜਿਵੇਂ ਸਿੱਖ ਪੰਥ ਦੀ ਖਾਲਸਾ ਲਾਇਬ੍ਰੇਰੀ ਦੇ ਵਿੱਚੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਗ੍ਰੰਥ ਗੁਰੂ ਘਰ ਦਾ ਇਤਿਹਾਸ ਦੁਰਲੱਭ ਹੱਥ ਲਿਖਤ ਖਰੜੇ ਸਮੇਂ ਦੀ ਭਾਰਤੀ ਫੌਜ ਔਰ ਸਰਕਾਰ ਦੀਆਂ ਏਜੰਸੀਆਂ ਲੈ ਕੇ ਇਸ ਬੜੇ ਮੁੱਲੇ ਨੂੰ ਆਪਣੇ ਪਾਸ ਜਿਨ੍ਹਾਂ ਨੇ ਲੋਕੋਂ ਕੇ ਰੱਖਣ ਦਾ ਯਤਨ ਕੀਤਾ ਉਥੇ ਦੰਦਗ੍ਰੰਥ ਟਕਸਾਲ ਦਾ ਵੀ ਬਹੁਤ ਵੱਡਾ ਸਰਮਾਇਆ ਜਿਸ ਵਿੱਚ ਗੁਰਬਾਣੀ ਦੇ ਪਾਵਨ ਪ੍ਰਾਰਥਨ ਸਤੀ ਗੁਰਬਾਣੀ ਦੀਆਂ ਹੱਥ ਲਿਖਤ ਕੋਥੀਆਂ ਔਰ ਮਹਾਂਪੁਰਸ਼ਾਂ ਦੀ ਰਚਨਾਵਾਂ ਦੁਆਰਾ ਕਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇ ਸ਼੍ਰੀ ਮੁਕਵਾਕਾਂ ਦੀ ਕਥਾ ਸੁਲਪੂਰਨ ਗੁਰ ਇਤਿਹਾਸਕੀ ਕਥਾ ਸ਼੍ਰੀ ਦਸਮ ਗ੍ਰੰਥ ਸਾਹਿਬ ਦੀ ਕਥਾ ਇਹ ਸਾਰੀ ਭਾਰਤ ਸਰਕਾਰ ਦੀ ਹਕੂਮਤ ਜੋ ਉਸ ਨੂੰ ਹੋਟਰਾ ਕੀਤਾ ਜਿਹਨਾਂ ਨੇ ਹਮਲਾ ਕੀਤਾ ਉਹਨਾਂ ਦੇ ਪਾਸ ਅਜੇ ਤੱਕ ਵੀ ਉਹਨਾਂ ਨੇ ਆਪਣੇ ਕੱਦਨੇ ਵਿੱਚ ਤਰੱਕੀ ਹੋਈ ਹੈ ਔਰ ਇਹ ਸਾਰੀ ਕਥਾ ਨੂੰ ਇੱਕ ਥਾਂ ਤੇ ਸਾਂਭਣ ਦਾ ਔਰ ਅੱਗੇ ਤੋਂ ਅੱਗੇ ਪ੍ਰਚਲਿਤ ਰੱਖਣ ਵਾਸਤੇ ਬਹੁਤ ਵੱਡੀ ਮਿਹਨਤ ਇਹਨਾਂ ਮਹਾਂਪੁਰਖਾਂ ਨੇ ਫੇਰ ਵੀ ਆਪਣੇ ਸੈਨੇ ਅੰਦਰ ਕੀਤੀ ਔਰ ਸੰਤ ਬਾਬਾ ਠਾਕੁਰ ਸਿੰਘ ਦੀ ਖਾਲਸਾ ਜੀ ਨੇ ਇਸ ਕਥਾ ਨੂੰ ਸੰਭਾਲਣ ਦੇ ਵਿੱਚ ਬਹੁਤ ਵੱਡੀ ਤਨਦੇਹੀ ਦੇ ਨਾਲ ਸੇਵਾ ਨਿਭਾਈ ਔਰ ਇਹਨਾਂ ਸਾਰੇ ਮਹਾਂਪੁਰਖਾਂ ਦੀ ਇਹ ਦਿਲੀ ਇੱਛਾ ਸੀ ਦੇਵਾਹੰਪੁਰਕਸਨ ਬਾਬਾ ਬਟਨ ਸਿੰਘ ਦੀ ਖਾਲਸਾ ਦੁਆਰਾ ਜੋ ਕਥਾਵਾਂ कथा ਸੰਪੂਰਨ ਕੋਨਕਾਰ ਤੋਂ ਲੈ ਕੇ 1810-20 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਪ ਨੇ ਸੰਕਾ ਨੂੰ ਸਰਵਨ ਕਰਵਾਈ ਜੋ ਟੇਪ ਦੇ ਅੰਦਰ ਰਿਕਾਰਡ ਕੀਤੀ ਗਈ ਸੀ ਉਹ ਖਾਲਸਾ ਦੇ ਸੰਕਾ ਦੇ डेढ़ साल तो तकरीबन इस कथा को करके उसे संगत अंदर पटल पर वास्ते ये जतन जारी हम अरदास इस गल दी दिलों सतगुरु महाराज जी का दास अपने दिलों और रों-रों करके सतगुरु तन श्री गुरु गोविंद सिंह साहिब महाराज जी दा तन श्री गुरु ग्रंथ साहिब जी दा ਰੋਮ ਰੋਮ ਕਰਕੇ ਸ਼ੁਕਰਾਨਾ ਕਰਦਾ ਹੋਇਆ ਬੇਨਤੀ ਕਰਦਾ ਹੈ ਕਿ ਇਹ ਕਥਾ ਨੂੰ ਸਾਫ ਕਰਨ ਵਿੱਚ ਔਰ ਇਸ ਕਥਾ ਨੂੰ ਸੰਤਾਨ ਦੇ ਚਰਨੀ ਪਰਚਲਿਤ ਕਰਨ ਵਾਸਤੇ ਜੋਰ ਪਰਾਲੇ ਕੀਤੇ ਗਏ ਹਨ ਕਿ ਸੰਤਾਨ ਨੂੰ ਪੂਰੀ ਪੂਰੀ ਸਾਫ ਵਾਗ ਦੇ ਅੰਦਰ ਇਹ ਕਥਾ ਸੰਤਾਨ ਦੇ ਪਾਸ ਪੁਚਾਈ ਜਾਵੇ ਔਰ ਇਸ ਲਈ ਕਿਸੇ ਵੀ ਕੰਪਨੀ ਦੇ ਨਾਲ ਵੀ ਅਤੇ ਹੋਰ ਕੰਪਨੀਆਂ ਦੇ ਨਾਲ ਵੀ ਤਾਲਮੇਲ ਕਰਕੇ ਜਿੱਥੋਂ ਕੇ ਕੰਵਿ जतन ਕੀਤਾ ਕਿ इस कथा ਦੀ ਸਫਾਈ कराई ਜਾਵੇ ਉਸ कथा ਨੂੰ साफ करके, ਸੰਗਤਾਂ ਦੇ ਵਿੱਚ ਪ੍ਰਚਲਿਤ करने ਲਈ ਜਾਰੀ ਕਰਨ ਵਾਸਤੇ ਇਸ ਪੱਤਾ ਦਿਹਾੜਾ ਕਿ ਅਸ਼ੋਕ ਦਿਨ ਖਾਲਸਾ ਪੰਥ ਦੇ ਅੰਦਰ ਪੂਰੇ 300 ਸਾਲ ਤੋਂ ਬਾਅਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਵਰਤਾ ਗਦੀ ਗੁਰਪੁਰਬ ਆਕ ਸ਼੍ਰੀ ਹਜੂਰ ਸਾਹਿਬ ਵਿਖੇ ਇਸੇ ਸਾਲ ਜੋ ਹੈ ਇਸ ਵਕਤ ਮਨਾਏ ਜਾ ਰਹੇ ਹਨ ਉਸ ਮੌਕੇ ਤੇ ਇੱਕ ਕਥਾ ਜਿਸ ਥਾਂ ਤੇ ਮਹਾਂਪੁਰਸ਼ਾਂ ਨੇ ਸੰਪੂਰਨ ਕੀਤੀ ਸੀ ਉੱਥੋਂ ਹੀ ਇਹ ਸੰਗਤਾਂ ਦੇ ਅੰਦਰ ਜਾਰੀ ਕੀਤੀ ਜਾ ਰਹੀ ਹੈ ਔਰ ਇਸ ਕਥਾ ਦੀਆਂ ਸੀੜੀਆਂ ਔਰ ਇਸ ਦੇ ਨਾਲ ਨਾਲ MP3 ਆਦਕ ਜੋ ਅੱਜ ਕੱਲ ਦੀ ਆਧੁਨਿਕ ਢੰਗ ਦੀ ਟੈਕਨੋਲੋਜੀ ਹੈ ਉਸ ਮੁਤਾਬਕ ਇਸ ਕਥਾ ਨੂੰ ਵੱਖ-ਵੱਖ ਐਸਟਾਂ ਦੇ ਵਿੱਚ सतगुरु महाराज जी की कृपा दे नाल ओस कथा के ਹਿੱਸੇ ਬਣਾ ਕੇ ਉਸ है। दास फिर भी ਦਾਸ करेगा ਵੀ अजे भी इस ਅਜੇ ਵੀ ਇਸ ਕਥਾ ਦੀ ਸੁਪਾਈ ਨ ਹੋਰ ਕਾफी ਸਮਾਂ ਲੱਗੇਗਾ ਜਿੱਥੇ ਕਿਥੇ ਸੰਗਤਾਂ ਨੂੰ ਸੁਣ ਵੇਲੇ ਕਥਾ ਦੀ ਆਵਾਜ਼ ਮਧਮ ਸੁਰ ਦੇ ਵਿੱਚ ਸੁਣਾਈ ਦੇਵੇ ਜਾਂ ਕੋਈ ਸੰਗਤ ਨੂੰ ਇਸ ਗੱਲ ਦਾ ਪਤਾ ਮੈਂ ਇਹ ਅੱਖਰ ਕੁਰਬਾਨੀ ਦੇ ਜਾਂ ਅੱਖਾਂ ਦੇ ਮਹਤਵ ਔਖਾਂ ਵੱਲ ਕਹਿ ਹੁੰਦੇ ਚਾਏ ਉਸ ਬਾਰੇ ਜਾਂ ਕਥਾ ਦੇ ਵਿੱਚ ਜੇ ਕਿਤੋਂ ਸਫਾਈ ਦੀ ਘਾਟ ਰਹਿ ਗਈ ਹੋਵੇ ਉਹ ਸੰਤਾਂ ਦਾਸ ਨੂੰ ਗੁਰਦੁਆਰੇ ਤਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਪ੍ਰਦਰਸ਼ਨ ਪ੍ਰਕਾਸ਼ ਮੈਂ ਤਾਂ ਚਾਹੁੰਕ ਸੂਚਿਤ ਕਰਨ ਦੀ ਕੋਸ਼ਿਸ਼ ਕਰਨ ਤਾਂ ਕਿ ਜਿਹੜੀ ਵੀ ਕੋਈ ਹੁਣ ਹੈ ਉਹ ਜਨ ਅੱਗੇ ਤੋਂ ਕੇ के ਕੇ ਸੰਤਾਂ सेवा सही ਸਹੀ ਤੰਗ ਰੋਕੀਤੀ ਦਾ ਸਕੇ ਸੁਦਾਤ ਸਮੁੱਚੀ ਦੰਦਨੀ ਟਕਸਾਲ ਵੱਲੋਂ ਇਸ ਕਥਾ ਨੂੰ 300 ਸਾਲ 31 ਅਕਤੂਬਰ 2008 ਨੂੰ ਇਸ ਸੁਭਾਗੇ ਦਿਹਾੜੇ ਤੇ ਲੀਡ ਕਰਨ ਦਾ ਬਹੁਤ ਮਾਣ ਮਹਿਸੂਸ ਕਰਦਾ ਹੈ ਔਰ ਸਰਗਰੂ ਜੀ ਦਾ ਰੋਮ ਰੋਮ ਕਰਕੇ ਇਸ ਪ੍ਰਣਾ ਕਰਦਾ ਹੈ अज ਇਸ ਪਾਵਨ ਸੁਭਾਗ ਦੇ 300 ਸਾਲਾ ਸਤਾਬ ਦੀ ਗੁਰਤਾ ਗਦੀ ਨਿਸ਼ਾਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗਦੀ ਪਾਵਨ ਪਰਵਤੇ ਇੱਕਾ ਸੰਗਤਾਂ ਦੇ ਅੰਦਰ ਪ੍ਰਚਾਰਨ ਹਿਤ ਸੰਗਤਾਂ ਦੇ ਅੰਦਰ ਜਾਰੀ ਕੀਤੀ ਜਾ ਰਹੀ ਹੈ ਇਸ ਸ਼ੋਕ ਕਾਰਜ ਦੀ ਦਾਸ ਸੋਚ ਖਾਲਸਾ ਪੰਥਨ ਤਮਦਵੀ ਟਕਸਾਲ ਵੱਲੋਂ ਬਹੁਤ ਬਹੁਤ ਵਧਾਈ ਦੰਦਾ ਹੈ ਔਰ ਇਸ ਕਥਾ ਗਿੰਨਾ ਵੀ ਸਿੰਘਾਂ ਨੇ ਰਾਤ ਦਿਨ ਮਿਹਨਤ ਕਰਕੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਨੂੰ ਅਸਮੁੱਛੇ ਸਿੰਘਾਂ ਦਾ ਔਰ ਖਾਸ ਕਰਕੇ 3C ਰਿਡ ਕੰਪਨੀ ਵਾਲਿਆਂ ਦਾ ਔਰ ਸਰਕਾਰ ਦੇ ਗੁਰਮੁਖ ਸਿੰਘ ਜੀ ਦਾ ਦਾ ਦਿਲੋਂ ਰੋਂ ਰੋਂ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ ਹੈ ਔਰ ਇਸ ਦੇ ਨਾਲ ਹੀ ਦਾ ਸੰਗਤਾਂ ਨੂੰ ਇਹ ਬੇਨਤੀ ਕਰੇਗਾ ਕਿ ਮਹਾਂਪੁਰਖਾਂ ਦੀ ਰਚਨਾ ਤੋਂ ਇਹ ਜੋ ਕਥਾ ਕਿ ਇਹ ਰਿਕਾਰਡ ਦੁਆਰਾ ਸੰਗਤਾਂ ਦੇ ਅੰਦਰ ਸਰਵਣ ਕਰਵਾਈ ਗਈ ਸੀ ਇਸ ਕਥਾ ਨੂੰ ਸੰਗਤਾਂ ਦੇ ਅੰਦਰ ਪ੍ਰਚਲਿਤ ਕਰਨ ਦੀ ਤੀਬਰ ਇੱਛਾ ਮਹਾਪੁਰਖ ਸੰਤ ਪਾਵਾਕਰਤਾਰ ਸਿੰਘ ਦੀ ਖਾਲਸਾ ਦੀ ਮਹਾਪੁਰਖਾਂ ਵਿੱਚ ਹੀ ਸੰਤ ਪਾਵਾਕਰਤਾਰ ਸਿੰਘ ਦੀ ਖਾਲਸਾ ਮਹਾਪੁਰਖ ਸੰਤ ਪਾਵਾਕਰਤਾਰ ਸਿੰਘ ਦੀ ਖਾਲਸਾ ਦੀ ਇਹਨਾਂ ਮਹਾਪੁਰਖਾਂ ਦੀ ਤੀਬਰ ਇੱਛਾ ਸੀ ਕਿ ਕਥਾ ਸੰਗਤਾਂ ਦੇ ਅੰਦਰ ਪ੍ਰਚਲਿਤ ਹੋ ਸਕੇ ਸੋਨਾ ਮਹਾਂਪੁਰਖਾਂ ਦੇ ਜੋ ਸੁਭ ਸੰਕਲਪ ਸਨ ਉਹ ਸਤਿਗੁਰੂ ਕਲਨੀ ਤਰਪਾਤ ਸ਼ਬ ਮਹਾਰਾਜੀ ਅੱਜ ਪੂਰੇ ਕਰ ਰਹੇ ਹਨ ਜਿਨ੍ਹਾਂ ਸਤਿਗੁਰਾਂ ਦਾ ਜੁਤੀ ਜੋਰ ਮਹਾਨ ਗੁਰਪੁਰਬ 3 ਨਵੰਬਰ ਨੂੰ ਇਸੇ ਹੀ ਅਰਦੇ ਦੀ ਕਿਰਪਾ ਦੁਆਰਾ 31 ਅਕਤੂਬਰ ਦਿਨ ਵੀਰਵਾਰ 2008 ਵਿਸ਼ਵ ਸੰਭਾਵੇ ਸਮੇਂ ਤੇ ਕੌਕ ਸ੍ਰੀ ਹਜੂਰ ਸਾਹਿਬ ਜੀ ਵਿਤੇ ਕੌਕ ਸ੍ਰੀ ਹਜੂਰ ਸਾਹਿਬ ਜੀ ਦੇ ਮੁਖ ਜਥੇਦਾਰ ਸਤਕਾਰਯੋਗ ਸ੍ਰੀ ਮਸਤੌਫ ਦੇ ਅਰਬਲਰ ਨੀ ਕੋਲਵਾਦ ਸਿੰਘ ਜੀ ਪਾਵਰ ਹੈਡ ਗ੍ਰੰਥੀ ਗਾਨੀ ਪ੍ਰਤਾਪ ਸਿੰਘ ਜੀ ਨੀਤ ਡੈਸਕਟਰ ਭਾਈ ਜੋਤਿੰਦਰ ਸਿੰਘ ਜੀ ਔਰ ਇਸੇ ਇਤਰਾ ਪਾਣੀ ਪਿਆਰਾਂ ਵਿੱਚੋਂ ਇਸ ਤਖਤ ਸਾਹਿਬ ਤੇ ਜੋ ਸੇਵਾ ਕਰ ਰਹੇ ਹਨ ਨੀਤ ਗ੍ਰੰਥੀ ਭਾਈ ਕਸ਼ਮੀਰ ਸਿੰਘ ਜੀ ਔਰ ਸੰਸਾਪ ਭਾਈ ਗਾਮ ਸਿੰਘ ਜੀ ਰਹਿਰਾਸੀ ਇਹਨਾਂ ਪੰਜਾਂ ਤਖਤ ਸਾਹਿਬ ਤੱਕ ਸ੍ਰੀ ਹਜੂਰ ਸਾਹਿਬ ਜੀ ਦੇ ਪੰਜ ਪਿਆਰੇ ਔਰ ਪੰਦੇ ਪਤਖਾਂ ਦੇ ਜਥੇਦਾਰ ਸਹਿਬਾਨ ਸ੍ਰੀ ਅਕਾਲ ਪੁਰਖ ਸਾਹਿਬ ਜੀ ਦੇ ਜਥੇਦਾਰ ਸਿੰਘ ਸੋਬਿਆਣੀ ਗੁਰਬਚਨ ਸਿੰਘ ਜੀ ਮੁੱਖ ਗ੍ਰੰਥੀ ਸਟਕਨ ਸ੍ਰੀ ਹਰਵੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਔਰ ਜਥੇਦਾਰ ਸ੍ਰੀ ਅਕਾਲ ਪੁਰਖ ਸਾਹਿਬ ਔਰ ਤੱਕ ਸ੍ਰੀ ਕੇਸਰ ਸਾਹਿਬ ਜੀ ਦੇ ਜਥੇਦਾਰ ਸਿੰਘ ਸੋਬਿਆਣੀ ਕਰੋਤਨ ਸਿੰਘ ਜੀ ਤੱਕ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਸਿੰਘ ਸੋਬਿਆਣੀ ਬਲਵੰਤ ਸਿੰਘ ਜੀ ਤੱਕ ਸ੍ਰੀ ਪਟਨਾ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਬੈਣੀ ਇਕਵਾਲ ਸਿੰਘ ਜੀ ਔਰਤਾਰ ਸ੍ਰੀ ਹਜੂਰ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਜਾਨੀ ਕੁਲਵੰਤ ਸਿੰਘ ਜੀ ਇਹਨਾਂ ਪੰਜੇ ਤਖਤਾਂ ਦੇ ਪੰਜਾਂ ਤਖਤਾਂ ਦੇ ਜਥੇਦਾਰ ਸਹਿਬਾਨ ਔਰਤਾਰ ਸ੍ਰੀ ਹਜੂਰ ਸਾਹਿਬ ਜੀ ਦੇ ਪੰਜਾਬ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਲੱਖਾਂ ਦੇ ਮਹਾਨ ਵਿਸ਼ਾਲ ਇਕੱਠ ਦੇ ਅੰਦਰ ਸੰਗਤਾਂ ਦੇ ਪਰਬੂਰ ਇਕੱਠ ਦੇ ਅੰਦਰ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਸੰਤ ਸਮਾਜ ਵੱਲੋਂ ਸਿੱਖ ਸੰਪਰਦਾਵਾਂ ਵੱਲੋਂ ਹਰ ਸਿੰਘ ਜਥੇਬੰਦੀਆਂ ਵੱਲੋਂ ਸਰਵਰੇਆਂ ਦੀ ਹਾਜ਼ਰੀ ਵਿੱਚ ਦੰਦਮੀ ਟਕਸਾਲ ਵੱਲੋਂ ਇਹ ਕਥਾ ਅੱਜ ਸੰਗਤਾਂ ਦੇ ਅੰਦਰ ਰਲੀਜ ਕੀਤੀ ਜਾ ਰਹੀ ਜਾਰੀ ਕਰਨ ਦੇ ਸੁਭਾਗੇ ਸਮੇਤ ਦਾਸ ਸਮੁੱਚੀਆਂ ਸੰਗਤਾਂ ਨੂੰ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਆਪਣੇ ਵੱਲੋਂ ਸਮੁੱਚੀ ਜਥੇਬੰਦੀ ਦੰਦਮੀ ਟਕਸਾਲ ਵੱਲੋਂ ਦੰਦਾ ਹੈ ਬੋਲੇ ਸੋ ਨਿਹਾਲ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 ਵਾਲੀ ਦੀ ਕਲਕਾ ਰੱਬ ਦੀ ਜਗੂ ਸਦੀ ਦੀ ਸਦੀ ਮਹਾਰਾਜ ਜੀ ਦੇ ਸੰਸਾਰੇ ਰੰਗ ਵਿੱਚ ਕੋਈ ਤਰਕ ਉਹ ਲੋਕ ਜਿਹਨਾਂ ਕੋਲ ਦੇਖਦੇ ਜਮਾ ਤੇ ਆਰਾ ਦੇ ਕੇ ਸੇਰ ਸਿੰਘ ਜੈਸਾ ਵੀ ਕਹਾਵਾਂ ਨੂੰ ਜੀਏ ਉਹ ਬਖਸ਼ਣ ਇਸ ਪ੍ਰਕਾਰ ਹੋਣਗੇ। ਅਗਾਂਹ ਕਰ ਕੁਆਰਕੀ ਗਿਆਨੀ ਸਤਿ ਪਾਵਨ ਸੰਤਖੇਲ ਗਿਆਨ ਕੋਰਵਾਰ ਸੁਖ ਹੋਣ। ਸੰਸਾਰ ਕਲਿਆਣ ਵਾਸਤੇ ਸਰਗਰਮ ਹੋਵੇ ਮਾਲਾ ਦਾ ਆਦਮਾ ਨੇ ਕਲਾ ਤਾਂ ਉਦਾਰ ਕਰਨੀ ਚਾਹੀਦੀ ਉਹ ਕਰਦਗੇ ਕੋਲ ਗੌਰ ਕਰਦੇ ਹਨ ਕਿ ਕੀ ਨਾਨਕ ਦੇਵ ਜੀ ਦਾਰ ਹਨ ਐਸੇ ਤਰ੍ਹਾਂ ਦੇ ਸਰਗਰਮੀ ਜਿਵੇਂ ਮਾਣ ਹਾਲਕਾਰ ਹਨ ਅਜਾ ਕਾਲ ਪ੍ਰਕਾਰ ਦੇ ਹੁੰਦੇ ਨੇ ਕੈਸਾ ਹਾਲਕਾਰ ਹੁੰਦਾ ਹੈ ਵਿਕਲਾਕਾਰ ਹੁੰਦਾ ਹੈ ਜਿਸ ਅਵਿਸ਼ਾਏ ਕਾਰ ਹੁੰਦਾ ਹੈ ਤੇ ਪੂਰਨ ਕਾਰ ਹੁੰਦਾ ਹੈ ਉਹਨੇ ਤੇ ਕੌਣ ਕਾਰ ਹੁੰਦਾ ਗੁਰੂ ਮਾਰਾ ਸਾਹਿਬ ਜਿਹੜੇ ਪੋਸਾਤ ਚਾਹੇ ਦੀ ਐਸਾ ਤਾਂ ਪਰ ਹਰਿ ਜੀ ਵਾਲੇ ਕਹਿੰਦਾ ਕੌਣ ਉਹ ਕੌਣ ਪਾਜੀਆ ਯਾਰ ਆਦੇ ਆਦੇ ਜਿਵੇਂ ਉਹਨਾਂ ਦੇ ਦੁਕਤ ਚੁਗਿਆ ਉਸ ਤੋਂ ਬਾਅਦ ਦੇ ਦੂਸਰੇ ਵੀ ਹਕੂਮਤ ਵਾਲੀ ਐਸੇ ਸੁਨੇਹਤਾਂ ਨੂੰ ਉਹਦੇ ਮਨ ਹੀ ਰਾਜ ਆਵਤ ਹੋਏ ਆ ਯਾਰ ਇਸ ਕਿਥੀ ਦਾ ਆਵਤ ਹੋਏ ਹਨ ਕਹਿੰਦੇ ਇਸ ਤਰ੍ਹਾਂ ਜਿਵੇਂ ਉਹ ਹਕੂਮਤ ਕਰਕੇ ਦੁਨੀਆ ਜਿੰਨੀ ਹੈ ਉਹ ਸਾਰੀ ਪ੍ਰੇਮ ਦੇ ਨਾਲ ਜੀਰ ਹੋ ਜਾਵੇ ਇਸ ਤਰ੍ਹਾਂ ਦੇ ਐਸਾ ਉਤਾਰ ਇਸੇ ਕਹਾਣੀਆਂ ਉਹ ਰਾਣੀ ਦਾ ਹਾਲੇ ਹੋਏ ਹੈ ਐਸਾ ਤਾਂ ਰਹਿੰਦਾ ਹੈ ਉਸਰਾ ਅਦੇਸ਼ਾਤਾਰ ਨਹੀਂ ਦੇ ਕੋਈ ਕਹ ਲਾਉਣਾ ਹੋਵੇ ਕੋਈ ਤਾਂ ਹਾਜੀ ਕਰਕੇ ਜਿਸ ਨੂੰ ਕਾਗਜ਼ ਬਚਾਵੇ ਉਹ ਉਸ ਨੂੰ ਅਦੇਸ਼ਾਤਾਰ ਕਰੀ ਜਾ ਹੈ ਇਸ ਤਰ੍ਹਾਂ ਉਸ ਦਾ ਅਦੇਸ਼ਾਤਾਰ ਪਰ ਮੰਨਿਆ ਗਿਆ ਹੈ ਉਸ ਨੂੰ ਜਦੋਂ ਕੱਟ ਦਿੱਤਾ ਹੈ ਹਿੰ ਕੱਟਣੇ ਕਰਕੇ ਜਦੋਂ ਨਹੀਂ ਜਿਸ ਦੀ ਸਲਤੀ ਅਦੇਸ਼ ਇਸੇ ਹੀ ਉਪਰਦੇਸ਼ਾਣਾ ਕਰਕੇ ਜਿਸ ਦੀ ਸਲਤੀ ਇਸ ਤਰ੍ਹਾਂ ਨਹੀਂ ਅਦੇਸ਼ਾਤਾਰ ਕਰਕੇ ਮੰਨਿਆ ਗਿਆ ਕੱਟਣੇ ਕਰਕੇ ਜਿਸ ਨੂੰ ਦੀ ਕਿਸ ਤਰ੍ਹਾਂ ਦੇ ਹੋਈ ਉਸ ਪ੍ਰਕਾਰ ਆਦੇਸ਼ ਹਾਕਰ ਕਾਹਨ ਜਿਸ ਨੂੰ ਕਿਸੇ ਵਾਲੀ ਸਕੀਆਂ ਨੂੰ ਖੋਪੜ ਕਰਕੇ ਦਰਨਾ ਹੈ ਜਿਸ ਪਾਸੀ ਉਹ ਪੈਸਰਾ ਆਦੇਸ਼ ਹਾਕਰ ਹੋਏ ਜੀਜੇ ਕਰਾਉਣ ਕਾਰ ਹੁੰਦਾ ਹੈ ਕਲਾਕਾਰਾਂ ਨੂੰ ਕਹਿੰਦੇ ਜੀ ਜੇ ਕੋ ਹੋਣ ਸੜਕੀਆਂ ਜਿਹੜੀਆਂ ਇਹ ਮੇਰੇ ਵਿੱਚ ਦੋ ਕਲਾ ਕਾਰ ਮੱਛੇ ਕਾਰ ਦੀ ਦੋ ਕਲਾ ਸਮੀਂ ਦੇ ਸਕਦੀਆਂ ਸੀ ਉਸੇ ਪ੍ਰਕਾਰ ਕਾਸ਼ੇ ਕਾਰ ਨੂੰ ਦੇ ਸਕਦੀਆਂ ਸਮੇਂ ਉਹ ਇਸ ਨੂੰ ਨਹੀਂ ਮਕਿੰਦਰ ਦਾ ਹਾਂ ਤੇ ਸੰਖੇਪ ਕਰੇ ਮਾਰੇ ਦੇਵ ਉਦਾਰੇ ਜੇ ਜਨਦਾ ਦਾ ਅਰਿਕਾ ਸਰਕਾਰ ਚ ਜੀ ਰੱਖਣ ਕਰਦੇ ਨੇ ਸਿਆਨ ਮਾਰਾ ਦੇ ਇਸ ਪ੍ਰਕਾਰੇ ਕਲਾਕਾਰ ਮੰਨਨੇ ਇਸੇ ਤਰ੍ਹਾਂ ਕੱਛੇ ਸਮੁੰਦਰ ਉੱਤੇ ਹੈ ਉਹ ਜਿਹੜੇ ਘਰ ਤੇ ਇਸ ਪ੍ਰਕਾਰੇ ਨਹੀਂ ਉੜਿਆ ਖੱਲੇ ਕਾਟੇ ਦੀ ਦੁਕਾਨਾਂ ਆਪਾਂ ਬਿਜਾਦੀ ਦੇ ਕੋਲੇ ਦੁਕਾਨਾਂ ਸੀ ਆਪ ਦੇ ਕੰਦੇ ਆਸ ਸੀ ਉਹ ਵੀ ਕੱਛੇ ਸੀ ਇਸ ਪ੍ਰਕਾਰ ਉਹ ਵੀ ਕਲਾਕਾਰ ਹੁੰਦਾ ਸੀ ਜੋ ਜਨਰਲ ਪ੍ਰਕਾਰ ਦੇ ਰਾਜੇ ਅਸਤਵਦਾਰ ਹਨ ਦਰਗਰਮ ਅਵਿਸ਼ਵਦਾਰ ਹੈ ਮਜਬੂਤ ਅਰਥੀ ਰਹੇ ਨੇ ਇੱਕ ਕਲਾਕਾਰ ਹਨ ਜੇ ਪੂਰਨ ਪੂਰਨ ਅਵਿਸ਼ਵਦਾਰ ਹਨ ਜਿਸਾਇ ਤੇ ਕਲਾਕਾਰ ਜਿਹੜੇ ਕੈਸੇ ਤੰਤਾਂ ਵਾਲੀ ਕੰਮ ਤਾਂ ਕਹੇਗਾ ਕਿ ਜਿਸਾਇ ਵੀ ਪੂਰਨ ਅਵਿਸ਼ਵਦਾਰ ਹਨ ਪੂਰਨ ਕਾਰਾਂ ਵਿੱਚ ਰਾਮਚੰਦਰ ਜੀ ਜਿਆ ਕਲਾਕਾਰ ਮੰਨਿਆ ਹੈ ਇਹਨਾਂ ਪ੍ਰੋਟੇਕੀ ਯੰਕਰ ਕੋ ਦੇਖਿਆ ਨਹੀਂ ਰਾਹੁਲ ਜੀ ਦਾਇਤ ਤੋਂ ਸ਼ਿਲਾ ਤੋਂ ਸੂਤਾਨੇ ਰਹਿ ਕਰਕੇ ਇਹ ਸੀ ਉਸ ਪ੍ਰਕਾਰ ਦੇ ਗੁਰੂ ਨਾਨਕ ਸਾਹਿਬਕਾਰ ਨਹੀਂ ਜਿਆ ਕਿਸੇ ਤੇ ਆਉਣੀ ਜਾ ਕੇ ਕੋਲ ਹੈ ਨਾ ਕੋ 16 ਕਲਾ ਵਾਲੇ ਮੰਨੀ ਗਏ ਇਹ ਕਹਿੰਦੇ ਯਾਦਵਾਲੇ ਕੰਮ ਯਾਹ ਕਰਕੇ ਕਿ ਤੰਨਵਾਲੀ ਅੱਛਾ ਕੀਤੀ ਸੀ ਮਹਾ ਭਾਰਗੇ ਨੇ ਬੜੇ ਤਾਰੀਕੀ ਬੀਤੇ ਹਨ ਇਹਨਾਂ 16 ਕਲਾਕਾਰ ਇਹਨਾਂ ਨੂੰ ਮੰਨਿਆ ਗਿਆ ਕਿਸੇ ਨਹੀਂ ਕੋਈ ਜੈਸੇ ਗੁਰੂ ਸਾਹਿਬਾਨੇ ਪੂਰਨ ਕਹਾਣੇ ਕਿਸੇ ਪ੍ਰਕਾਰ ਨਿਯਮਦਾ ਹੈ ਜੀ ਮਾਰੇ ਸਾਹਿਬ ਕਿਸੇ ਪ੍ਰਕਾਰ ਦੀ ਨਿਯਮਦਾਨੀ ਨੂੰ ਜੀ ਨਿਯਮਾਇਕ ਪ੍ਰਕਾਰ ਸਾਜੀ ਪੂਰਨ ਹੋਣੀਏ ਜੀ ਰਾਮਚੰਦਰ ਜੀ ਜੀ ਮਾਤਾ ਕੋ ਸੁੱਮਿਆ ਦੇ ਬੇਲੀ ਦੀ ਪੂਜਾ ਕਰਨ ਆਪਕੇ ਕੋਈ ਜੀ ਉਹ ਹੋਏ ਬੇਲੀ ਕੋ ਪੂਜਾ ਕਰਨ ਗਈ ਰਾਮਚੰਦਰ ਜੀ ਆਪਣੇ ਸਰੀਰ ਨੂੰ ਮਾਤਾ ਨੂੰ ਸੁੱਮਿਆਉਣੇ ਕਰਨਾ ਸੀ ਉਸ ਪ੍ਰਕਾਰ ਕਰਕੇ ਨਾਮ ਲਈ ਮਾਰੇ ਸਾਹਿਬ ਨੇ ਇਨਕਾਰ ਕਰਿਆ ਜੀ ਨਹੀਂ ਕਰਨੇ ਚਾਹਵਤ ਜੀ माता त्रिकालिनी को कौन से के बाद चाहिए आप अपने जंतकार के सहायक सारे देश के लिए सहायता पूजन करवेगा मैंने कोई सलाह के बारे सारे खुले नाला कहा कि जमीन में से बात करने के आगे हमारे के महाराज श्री के आप आधार करने आते नहीं ये सभी आप रक्षा करने आते नहीं इस प्रकार माता त्रिकालिनी यहां के जैसा देखा सजना ने देखो कि सजना ने शिविर से चलेंगे लगते हो तो कानून नहीं है ਮਾਤਾ ਜੀ ਨੇ ਸਰਦਾ ਹੋਏ ਕਿ ਗੁਰੂ ਸਾਹਿਬ ਪ੍ਰਮੇਸ਼ਰਵਾਲ ਸਹਾਰ ਹਨ ਪਰ ਉਸੇ ਨੇ ਸਲਗਣਾ ਆਪਣੀ ਕਲਾ ਨੂੰ ਸਿਖਾਇਆ ਸੀ ਮਾਤਾ ਦੇ ਤੋਂ ਮਾਇਆ ਭਾਗਰ ਤੋਂ ਇੱਕ ਜਨ ਆਗਮੀ ਨੂੰ ਜਿਤਨਾ ਦੁੱਖੇ ਦੇ ਕੋ ਮੋਜ ਨੂੰ ਆਉਂਦੇ ਬੋਲ ਕਹੇ ਮੰਗੇ ਮਾਤਾ ਨੂੰ ਮੋਹ ਵਿਚਾਰਾ ਇਹ ਗਿਆਨ ਖੁੱਲ ਗਿਆ ਇਹ ਮੋਹ ਵੀ ਮਾਤਾ ਦੇ ਕਾਂਤੀ ਸੀ ਉਹਨਾਂ ਦੇ ਤੋਂ ਮਾਤਾ ਨੇ ਆਪਣੀ ਜੀਵ ਦੇਤੀ ਦੇ ਤਾਈ ਉਸੇ ਪ੍ਰਕਾਰ ਕ੍ਰਿਸ਼ਨ ਦੀ ਮੋਹ ਅੱਡ ਕਰਕੇ ਕਿੰਝ ਹੋਏ ਸੀ ਜੀ ਪੁਪਾਨ ਦੇ ਬਾਨੇ ਜੀ ਸੁਹਾਗ ਲੱਗੀ ਸੀ ਦਿਖਾਇਆ ਸੀ ਨਹੀਂ ਅੱਜ ਕੋਈ ਸੀ ਸਾਰੀ ਜਿਸੇ ਖਾਤੀ ਸੀ ਨੂੰ ਦੇ ਵਿਦਿਆ ਇਸ ਪ੍ਰਕਾਰ ਸਾਹ ਕਰਦੇ ਜੀ ਕੋਈ ਸੰਕੀ ਗੁਣੋਂ ਸੰਗਰਾਂ ਦੇ ਤੇ ਸਤਿ ਇਨਸਾਨ ਕਰਨੀ ਤੇ ਜਿਵੇਂ ਸਾਹ ਗੱਲ ਨਹੀਂ ਜੇ ਇਸ ਪ੍ਰਕਾਰ ਕਰਨ ਨਾਲ ਮੱਥਾ ਛੜ ਜਾਂਦਾ ਇਸੇ ਪ੍ਰਕਾਰ ਸਾਥੀ ਵਿਸ਼ਿਆਂ ਨੂੰ ਹੋਂਟਾ ਤੇ ਲੱਗਦੇ ਹਨ ਤਾਂ ਹੀ ਦੇਖੇ ਉੱਪਰ ਤੋਂ ਹੋ ਰਹੇ ਲੱਗਦੇ ਹਨ ਕੋਈ ਨਹੀਂ ਕਿ ਉਹ ਭਾਰਤ ਦੇ ਨਾਲ ਦੇ ਚਾਹਲੇ ਦੇ ਰਿਸ਼ਤੇ ਸਾਡੇ ਦੇ ਇਸ ਸੰਗਤੀਆਂ ਦੇ ਗੱਲ ਸਕਦੀਆਂ ਨਹੀਂ ਕਿ ਕੋਈ ਉਸ ਪੱਲਾ ਮਾਰੇ ਸਾਡੇ ਲਾ ਕੇ ਹੁਣ ਤੱਕ ਕਹਾਣੀਆਂ ਕੱਢ ਰਹੇ ਇਹ ਕੋਈ ਕੱਢ ਰਹੇ ਪਰ ਪੰਜਾਬ ਇਸੇ ਤਾਰੇ ਤੇ ਲਗਾਓ ਕਿ ਤੇਰਾ ਮਾਰਾ ਇਹ ਹੱਥਾਂ ਦੇ ਲੱਗੇ ਲੱਗੇ ਹੋਏ ਹਨ ਇਹ ਸੰਗਤੀਆਂ ਵਿਛੜ ਸਕਦੀਆਂ ਉਹ ਗੁਰੂ ਸਾਹਿਬ ਪੂਰੇ ਹੰਗੇ ਉਹਨਾਂ ਇਜ਼ਾਰਾਂ ਨੇ ਕਿਸੇ ਪ੍ਰਕਾਰ ਕੱਢੀ ਨਹੀਂ ਹਨ ਬਲਕਿ ਝਲਕੀਆਂ ਕਰਕੇ ਬੇਹੰਤ ਅੰਗਰੇ ਮਾਰੇ ਸਾਡੇ ਕਾਰਜ ਲਈ ਸਭ ਤੋਂ ਮੰਨਦੇ ਹੋ ਕਿ ਤੇ ਗਾਲੀ ਨਾ ਲਾ ਕੇ ਕੀ ਕਰਨਾ ਅਜਿਹਾ ਸਿੱਧਾ ਕਰਕੇ ਗਾਲੀ ਮਾਰਨਗੇ ਕਹਿੰਦੇ ਮੱਤੇ ਦੇ ਮਨਾਰੇ ਮਨਾਰਾ ਨਹੀਂ ਹੈ ਇਹਨਾਂ ਦਾ ਹਾਰਿਆਂ ਦੇ ਲਿਖੇ ਹੋਏ ਜਾ ਕੇ ਨਿਖਾਲਿਆ ਇਹਨਾਂ ਕੌਂਟੇ ਤੋਂ ਜਾ ਰਹੇ ਹਨ ਸਰਕਾਰ ਨੇ ਦੇ ਨਾਗਰਿਕਾਂ ਨਕਾ ਹੁਏ ਹੈ ਉਹਨਾਂ ਦਾ ਕੋਈ ਆ ਕੇ ਕਰਨੀ ਜਿੰਨਾਰੇ ਸਾਡੀ ਜੰਤ ਕਲਪੀ ਅੱਧੇ ਤਰ੍ਹਾਂ ਕਰਕੇ ਨਾ ਉਤਾਰਨੋਂ ਨਹੀਂ ਸਕਦੀ ਕਲਪੀ ਮਾਰੇ ਸਾਡੀ ਤੇ ਸੈਤਨੀਆਂ ਜੰਤ ਕਲਪੀਆਂ ਦੇ ਨਾਲ ਕਰ ਕਲਪੀ ਨਾਲ ਕਰਕੇ ਆ ਕੇ ਕੰਨ ਜਿਹੜੀਆਂ ਇੱਕ ਤਾਂ ਜੰਤ ਕੀ ਇੱਕ ਪ੍ਰਕਿਰਿਆ ਦੁੱਗੀ ਕੋਈ ਕਰਤਾ ਕੋ ਉਸੇ ਤਰ੍ਹਾਂ ਕਰ ਦੇਗੀ ਤੇ ਸਾਰੀਆਂ ਜਿਹੜੀਆਂ ਚੀਜ਼ਾਂ ਮਾਰੇ ਸਾਡੀ ਇਹ ਵੀ ਜੰਤੀ ਹੈ ਸਰੀਰ ਹੈ ਉਹਨਾਂ ਦਾ ਦੇ ਸਰੀਰ ਨੂੰ ਦੇਖ ਕੇ ਰਾਮਕੰਲੀ ਦੇ ਸਿਰ ਉੱਤੇ ਬੈਠਣਾ ਮੇਰੇ ਅਨੁਸਾਰ ਵਾਸਤੇ ਅਜਿਹਾ ਸੀ ਇਹ ਖਿਆਲ ਕਰੀਏ ਕਿ ਇਹ ਖਿਆਲ ਕਰੀਏ ਕਿ ਜਨਕਪੁਰ ਦੀ ਜਿੰਨ ਲੜਕੀਆਂ ਦੀ ਸਾਰੀਆਂ ਆਰੰਗਪੁਰ ਦੀ ਮੋਤ ਹੋ ਰਹੀਆਂ ਨੇ ਇਸ ਕੋਈ ਬੰਗਾਲਿਆ ਨੂੰ ਬੋਕ ਕੇ ਨਾ ਰਹਾ ਨਾ ਕੋਈ ਨੂੰ ਬੋਕ ਕੇ ਇਹਨਾਂ ਨੂੰ ਮਰਨਾ ਕੀਤਾ ਜਾਂ ਕਰਨ ਲਈ ਕੋਈ ਧੀਨੋ ਵੇਖ ਨੂੰ ਵੇਖ ਕਰਕੇ ਕਹਨ ਭਾਗਨਾ ਚਾਹਦਾ ਹੋਈਆਂ ਨੇ ਇਸਤਰੀਆਂ ਪਰ ਜਿਹੜੇ ਨਾਨਕ ਦੇਵ ਜੀ ਦੇ ਬਾਗੀ ਦੇ ਸੰਗਲਾ ਦੀ ਜੇ ਹੈ ਉਹ ਚੰਨਾਂ ਬਲੀਆਂ ਨੂੰ ਗੁਸ਼ਾਇਨ ਕਰਨਾ ਚਾਹਿਆ ਗੁਰੂ ਸਾਹਿਬ ਨੇ ਨਦੀ ਜੀ ਦਾ ਹੰਪਾ ਹੰਸੀ ਜੀ ਦੀ ਸ਼ਾਂਤੀ ਵਕਤੀ ਇਹ ਗੁਰੂ ਸਾਹਿਬ ਦੀ ਸ਼ਰਧੀ ਜਗਦਾ ਹੈ ਇਹ ਜਗਤੀ ਜਗਦਾ ਹੈ ਸ੍ਰੀ ਨੂੰ ਉਹਨਾਂ ਕੀਤੀ ਹੈ ਇਹ ਸੰਦਰ ਬਾਰਾ ਭਾਈਆਂ ਦੇ ਧਿਆਨ ਕਰਨਾ ਆਪੇ ਸੰਦਰਾ ਹਨ ਕੋਈ ਸ਼ਰਧਾ ਦੀ ਵਿਸ਼ੇਸ਼ਤਾ ਇਹ ਵਰਦਾਰੀ ਨਹੀਂ ਹੋਰ ਲੰਕਾ ਦਾ ਹੋਰ ਸਮਝਦੇ ਨੇ ਇਸ ਪ੍ਰਕਾਰ ਗੁਰੂ ਦੇ ਅੰਦਰ ਵਿਸ਼ੇਸ਼ਤਾ ਤੇ ਜਗਤੀ ਦੇ ਦੀ ਦੇਵੀ ਵੀ ਬਹੁਤ ਦੇਖਦਾ ਹੈ ਉਨੇ ਨੇ ਨਾ ਕਿਸੇ ਪ੍ਰਕਾਰ ਦੀ ਕੋਈ ਬਰਾਦਰ ਰਸਮਾਂ ਨੂੰ ਲੱਭਣ ਦੀ ਤੜੀ ਕੱਢੀ ਹੱਦਾਂ ਕਰਕੇ ਉਸੇ ਪ੍ਰਕਾਰ ਸੰਕਤੀ ਨਹੀਂ ਲੱਭਿਆ ਨੂੰ ਇਹ ਦੇਖਣਾ ਕਿ ਇਹ ਪ੍ਰਕਾਰ ਦੇ ਹਾਕ ਬਣਾ ਲੈਣੇ ਬਾਤ ਨਹੀਂ ਸੰਕਤੀ ਦੇਸੀ ਜਿਸ ਤਾਲੀ ਬਣ ਗਏ ਵਾਲੇ ਸਭ ਕਾਰਗਾ ਇਹ ਗੰਭੀਰ ਤਰ੍ਹਾਂ ਹੰਗੂ ਦਾ ਅਰਥ ਹੈ ਇਸ ਤਰ੍ਹਾਂ ਉਹ ਸਬਜਕਤੀ ਤੇ ਦਿੱਤੀ ਜਿਦੀ ਹੰਤੰਦਗੀ ਚੈਨ ਬਣਾ ਦੇ ਕੋ ਤਰ੍ਹਾਂ ਵਿਦਿਆਵ ਸੰਕਤੀ ਉਹ ਬਸਿਆ ਕੇ ਬਣਾ ਦਿੱਤੀ ਕੋਈ ਕੋੰਬਰਾ ਨੂੰ ਲਾ ਦੇ ਜਿਹੜਾ ਅਰੰਗ ਤੇ ਨਿਗੋੜ ਬਣਾ ਦੇ ਕੋਈ ਅਬ ਇਹ ਤ੍ਰਿਹੂਪੁਰ ਹੰਦੀ ਨੇ ਜਿਹਨ ਕੋ ਪਾਛੇ ਅੱਠ ਗਰਾਹ ਦੀਆ ਗ੍ਰਾਂਟ ਦਿੱਤੀ ਉਸ ਪ੍ਰਕਾਰ ਦੀ ਗੁੱਤੀ ਸੀ ਪਰ ਸਰਗਰਾਂ ਹਾਨੁਕਦੇਵ ਜੀ ਨੇ ਕਹਿੰਦਾ ਵਾਤੇ ਬਾਤੇ ਕਾਂਲੀ ਨੂੰ ਕਾਹਦੇ ਤੋਂ ਕਾਂਲੀ ਤਾਂ ਖਾਇਆ ਜਦੋਂ ਗੁਰੂ ਮਾਰੇ ਸਾਹਿਬ ਨੇ ਕਹਿੰਦੇ ਜਿਹੜੀ ਅੱਗੇ ਦਿਨ ਗੁਰੂ ਮਾਰੇ ਹੋਰ ਲੜਕਿਆਂ ਨੂੰ ਪੜਦੇ ਵੇਖੇ ਤੁਸੀਂ ਪੜਦੇ ਨਹੀਂ ਹੋ ਇਹਨੂੰ ਕਹੇ ਜੀ ਇਹ ਸਾਈਂ ਕਰਕੇ ਤਾਂ ਸਾਹੇ ਗਾਲੀ ਬੰਦੀ ਹੈ ਤੂੰ ਵਾਸ਼ੇ ਜਿਦ ਕਰਕੇ ਬਾਹੇ ਲੈ ਇਹ ਕਿਹਾ ਮਾਰਾ ਨਹੀਂ ਤਾਂ ਉਹ ਜਹਾਜ਼ ਨਹੀਂ ਆ ਕੇ ਕਾ ਕਰਕੇ ਦੇਖੋ ਤਰੀਹਾ ਜੀ ਸ਼ਰਦਨਾ ਜਾਲਮੋ ਫਤਮਸ ਕਰਮਤਾਂ ਦੇ ਕਰ ਸਾਰ ਬਹੁਤ ਕਲਮ ਕਰਕੇ ਕਿ ਨਜ਼ਾਰੀ ਫਿਰ ਤੋਂ ਜਿਵੇਂ ਕਿ ਵਿਚਾਰ ਇਹ ਕਿ ਮਾਂ ਸਲਾਹ ਲੇਖ ਲਿਖ ਅੰਤਨਾਬਾਰਾ ਵਾਲ ਉਹ ਬਕਨ ਕਹੇ ਕਿ ਉਹ ਹੀ ਵਿਦਿਆ ਪੜਾਉਣ ਵਾਲੇ ਬਾਦ ਦੇ ਦੀ ਮਿੱਠਾ ਕਰਕੇ ਤਸल्ली ਕਰਕੇ ਜਦੋਂ ਬਾਬਾ ਕਾਲੀ ਦੂਏ ਨੂੰ ਵੇਖੇ ਗਿਆ ਕਿ ਮਾਰਾ ਇਹਨਾਂ ਨੇ ਪੜਾਇਆ ਕਿਸੇ ਉਹ ਵਕਤ ਬਾਦ ਨਹੀਂ ਕਿਹਾ ਮਾਰਾ ਸਾਹ ਗੁਨਾਹ ਪੜਾਏ ਪੜ੍ਹੇ ਅਵਰ ਪੜਾਏ ਹਨ ਉਹ ਬੰਨੇ ਕੋ ਕਰਨਾ ਪਾਲਾ ਇਹਨਾਂ ਨੇ ਪੜੰਗੇ ਸਾਇੰਸ ਕੋ ਤੇ ਕਰਕੇ ਸਭ ਵਿਗਿਆਨ ਨੂੰ ਜਾਨਣਾ ਜਿੰਨੇ ਸਮੂਹ ਵਿਗਿਆਨ ਦੇ ਹੇਠਲੇ ਬੰਨਾਂ ਵਿਚਾਰੀ ਖਾਨੇ ਉਸ ਪ੍ਰਕਾਰ ਜਿਹੜੇ ਉਹਨਾਂ ਵਾਲੇ ਪ੍ਰਕਾਸ਼ ਪੜ੍ਹਾਉਣ ਵਾਲੇ ਉਹਨਾਂ ਨੇ ਸਕੇ ਪਾ ਕੇ ਅਨੁਭਵ ਦੇ ਕੇ ਇਹ ਹਲ ਕਰਦਾ ਦੇ ਸੰਸਕ੍ਰਿਤ ਨੂੰ ਉਸ ਪ੍ਰਕਾਰ ਸਾਧ ਗੁਰੂ ਮਹਾਰਾਜ ਸਾਹਿਬ ਦੀ ਵਿਗਿਆਨ ਦੀ ਜੇ ਕਰ ਉਹਨਾਂ ਨੇ ਮਿਲਵਾ ਜਨਾਈ ਕਰਾਇਆ ਕਿ ਕਹੀ ਗੁਰੂ ਮਹਾਰਾਜ ਸਾਹਿਬ ਜਨਾ ਪੜ੍ਹਾਇਆ ਕਦੀ ਆਪ ਹੀ ਕਰਦੀ ਇੱਕ ਸੱਜਣੀ ਸਾਰੀ ਕਾਲ ਨੇ ਲਿਆ ਜੋਹੋ ਪ੍ਰਕਾਰ ਫਾਰਸੀ ਲੰਬਾ ਨੂੰ ਆਪੇ ਜਿਹੜਾ ਆਖਣ ਨੂੰ ਕਿਹਾ ਗਿਆ ਨੀਂਦ ਦੀ ਕਾਰਨ ਲਈ ਉਹ ਰੂਸ ਦੇ ਕਾਰਨ ਪਹਿਲੇ ਵੀ ਜਦਕਾਰ ਦੀ ਕੁਤੰਤੇਸ ਤੋਂ ਬਾਅਦ ਗੋਸ਼ਣ ਕਰਤਾ ਹੈ ਤੇ ਰੋਗ ਦਾ ਖਾਲੀਨ ਹਾਲ ਹੋ ਗਿਆ ਇਸ ਪ੍ਰਕਾਰ ਵੀ ਮਾਰੇ ਸਾਡੀ ਪ੍ਰਗਿਆ ਬੁੱਧੀ ਆਈ ਨੋ ਇਹ ਬੁੱਧੀ ਗੁਰੂ ਸਾਹਿਬ ਦੀ ਬੁੱਧੀ ਬੁੱਧ ਨਹੀਂ ਹੈ ਉਹਨੇ ਸਾਰੇ ਨੂੰ ਬੁੱਧੀ ਕਰਵਾਈ ਹੰਗੇ ਇਸ ਕਰਕੇ ਜਿਹੜੀ ਪ੍ਰਗਿਆ ਸੰਤਿ ਦੇ ਯਕਤੀ ਦੇ ਉਸ ਸੰਤਿ ਨੂੰ ਦੇ ਦੀ ਪ੍ਰਗਿਆ ਉਸੇ ਪ੍ਰਕਾਰ ਤੇ ਜਿਵੇਂ ਮੇਰੇ ਅਸਾਂ ਦੇ ਪਾਸ਼ਾਲੇ ਪ੍ਰਕਾਸ਼ ਕਰਤੋਂ ਕੋਣਾ ਹੈ ਪਰ ਸਾਹਿਬ ਜੰਗੀ ਇਰਾਨ ਕੰਦਰ ਜੀ ਜਿਹਾ ਯਾਰ ਹੋਣੇ ਨਿਮਰ ਸੀ ਤੇ ਕਾਬ ਦੇ ਪੋੜਾ ਉਤਾਰ ਘਾ ਰਿਆ ਉਹਨਾਂ ਨੇ ਕਰਤਬ ਕੀਤਾ ਬਣਾਵਾ ਜੀ 14 ਸਾਲ ਕਰਕੇ ਉਥੇ ਸਿਖਾਵਾ ਦੇਣ ਕਿਹਾ ਤੇ ਨਯਾਉਨ ਮਾਰ ਕੇ ਦੇਖਣੇ ਚਾਹੇ ਸਿਵਾ ਦੇ ਆਏ ਤੇ ਜੇ ਇਰਾਨ ਕੰਦਰ ਜੀ 14 ਸਾਲ ਬਾਅਦ ਆਏ ਕਿ ਸਾਡ ਕਰਦੇ ਐਸਾ ਨਿਆ ਸਿੱਖਾ ਕਿ ਮਾਤਾ ਪਿਤਾ ਦੇ ਪੁੱਤਰ ਕੋਈ ਨਾ ਹੋਵੇ ਉਹ ਗਿਆ ਹੈ ਇੱਕ ਬ੍ਰਾਹਮਣ ਦਾ ਪੁੱਤਰ ਗੁਜਰ ਗਿਆ ਬ੍ਰਾਹਮਣ ਲਾਲਚੰਦਰ ਕੋਲ ਆ ਕੇ ਸੁਦਾਗ ਲਈ ਕਿ ਸਾਡੇ ਰਾਜ ਦੇ ਪਰਿਵਾਰ ਵਿੱਚ ਮਾਤਾ ਜੀ ਦਾ ਪੁੱਤਰ ਨਾ ਗੁਜਰ ਰਿਹਾ ਮੇਰਾ ਪੁੱਤਰ ਗੁਜਰ ਗਿਆ ਹੈ ਤੁਸੀਂ ਇਹਨੂੰ ਜੀਉਂਦਾ ਕਰੋ ਅਰੰਚੰਦਰ ਜੀ ਨੇ ਪਾਣੀ ਪੁੱਛਿਆ ਕਿ ਉਹ ਸੁਗਰ ਕਾ ਕਰਣ ਲੱਗੇ ਸਰ ਕੇ ਮੇਰਾ ਪੁੱਤਰ ਗੁਜਰ ਗਿਆ ਹੈ ਉਹ ਸੰਕੂਪ ਨਾਮ ਹੈ ਸੁਗਰ ਸੁਗਰ ਕਰ ਰਿਹਾ ਸੀ ਰਾਮਚੰਦਰ ਨੇ ਜਾ ਕੇ ਬ੍ਰਾਹਮਣ ਦਾ ਪੁੱਤਰ ਜੀ ਕਿਹਾ ਕਿ ਤਾ ਦਾ ਕਰਵਾਣਾ ਹੈ ਕਰਵਾਣੇ ਉਹਦਾ ਉਹ ਬਾਲੀ ਦੀਆਂ ਵਾਂਗ ਸੋ ਦੂਸਾਰ ਮੰਗਲ ਦੀ પ્રસੰਗ ਹੋਗਾ ਇਸ ਤਰ੍ਹਾਂ ਦਾ ਰੈਂਕਿੰਗ ਵੀ ਇੰਨਾ ਚਲਾ ਕਰ ਦੇਣ ਇੱਕ ਕੱਦ ਪਿੱਛੇ ਹਨ ਇਸੇ ਪ੍ਰਕਾਰ ਉਹ ਹੈ ਕਿ ਕੱਦ ਬੜੀ ਸੰਗਰੂਨ ਆਨਗੋਲਾ ਕਰਦਾ ਹੈ ਉਹ ਸਾਰੇ ਸੰਗਤ ਦੀ ਸਾਰੇ ਇਹਨਾਂ ਗਿਆਨ ਸੁਲਿਟਾਏ ਕਿ ਸਪੇਕਟਾਂ ਜੀ ਅਖਾਈ ਮੋਦੀ ਖਾਨੇ ਦੀ ਤਾਰ ਕਿ ਲਈ ਸੁਲਤਾਨ ਹੋਏਗੇ ਤੋਂ ਬਾਅਦ ਦੇਵੀਵਾਰਾ ਨਾਲ ਸਾਥ ਕੇ ਪੜਸਾ ਸਦਖੰਡ ਵੀ ਜਾ ਕੇ ਆਪੇ ਸਾਰੇ ਸ੍ਰੀ ਗੁਰੂ ਦਾਰਬਾਰ ਦੇ ਸਾਹਮਣੇ ਸਮੇਤ ਕਰਕੇ ਨਵੇਂ ਖੰਡਾ ਦੇ ਸੱਚੇ ਦੀਪਾਂ ਦੇ ਇਹਨੇ ਗੁਰੂ ਸਾਹਿਬ ਜੀ ਨਾਲ ਕੋਈ ਵਿਕਾਰ ਕਰਕੇ ਸਰਫੰਦੀ ਕਰਾਉਂਦਾ ਕੋਈ ਉਦਾਰ ਵੀ ਕੋਈ ਪਤੰਦਰ ਦੀ ਬਿੱਦਿਆ ਹੋਈ ਇਹਨੇ ਸਚਨਾਲ ਦਾ ਝੰਡਾ ਚੁਲਾਇਆ ਜੋ ਕੁਝ ਗੁਰੂ ਸਾਹਿਬ ਦੇ ਕੋਲ ਨਹੀਂ ਹੋ ਸਕਦਾ ਕੰਨ ਪਾਂਚਾਉਣ ਨੂੰ ਕਿਹਾ ਬਾਦੇ ਪਰਿਵਾਰ ਕਿੱਥੇ ਨਵੇਂ ਖੰਡਾ ਸੱਚਾ ਜੁਆ ਇਹ ਗੁਰੂ ਮਾਰਾ ਸਾਹਿਬ ਦਾ ਪ੍ਰਕਾਸ਼ ਹੈ ਜੇ ਕੋਈ ਸਤਿਕਾਰ ਨਹੀਂ ਕੋ ਚਾਰ ਬਲਾਏ ਹਰਨੀਆ ਚੜਤੀ ਤੇ ਜਲਦੀ ਤੇ ਪ੍ਰਗਿਆ ਤੇ ਇਸੇ ਪ੍ਰਕਾਰ ਸੰਸਨੀ ਦੀ ਪ੍ਰਗਿਆ ਦਿੱਤੀ ਕਿ ਤਨਵ ਪ੍ਰਵੇਦਨ ਸਿੱਧੀ ਕੀਤੀ ਸੀ ਜੀ ਸਾਹਿਬ ਜੀ ਮਾਰੇ ਸੰਗਤਾ ਰਾਮ ਸਿੰਘ ਜੀ ਦਾ ਸਿੱਤਾ ਸੁਹਾਕੇ ਲੰਗੀ ਤੇ ਰਾਜ ਕੀਤਾ ਉਸੇ ਦਾ ਗਿਆਤ ਨੂੰ ਉਸੇ ਨੂੰ ਦੇਣਿਆ ਤੇ ਤੁਸੀਂ ਤੋਂ ਆਉਣੇ ਰਿਸ਼ੀ ਕੋ ਸਰਾਹ ਕਰਾ ਕੇ ਜਗਮਾਨੀ ਕੋਈ ਨਿਸ਼ਰਾਦ ਕੀਤਾ ਆਜੀ ਰੋਕਰ ਕੇ ਕਿ ਤਨਵ ਸਿੱਧੀ ਤੂ ਸਾਹਿਬ ਜੀ ਇਹੋ ਗਿਆਨ ਮੁਖ ਭਰਤੀ ਦੇ ਵਰਤਨ ਬਣਾਇਆ ਹੈ। ਆਪੋ ਸਿੱਖੀ ਦਾ ਜਿਹੜਾ ਦੁਨੀਆਂ ਦੇ ਉੱਤੇ ਪ੍ਰਵਾਹ ਲਾਇਆ ਸੁਖਾਵਾਸ ਤੇ ਨਾਮ ਦਾ ਪ੍ਰਵਾਹ ਚੱਲਦਾ ਨਹੀਂ। ਤੇ ਸੰਗਤ ਬਣਾ ਕੇ ਇਸੇ ਤਰ੍ਹਾਂ ਦਿਖਲਾਵਾ ਸੀ। ਜੇ ਬਣਾਈ। ਜੇ ਸੰਗਤਾਂ ਤੇ ਜਿਹੜੀ ਬਖਸ਼ੀ ਕੀਤੀ ਹੈ ساری ਦੁਨੀਆਂ ਨੂੰ ਬਿਖਰੀ ਨਗਰਾਂ 'ਚ। ਉਹ ਗੁਰੂ ਸਾਹਿਬ ਜੀ ਨੇ ਕੀਤੀ ਹੈ। ਇਸ ਪ੍ਰਕਾਰ ਮਾਰਾ ਸਾਸਰ ਦੇ ਕਾਰਜਾ। ਸੰਕੂਰ ਕਰਕੇ। ਅਤੇ ਇਸੇ ਪ੍ਰਕਾਰ। ਮੁਕੀ ਕਰਕੇ ਪਰਬਾ ਕਰਕੇ ਕਿ ਆਜੀ ਇਹਦੇ ਆਰੰਭ ਤੋਂ 10000 ਰੁਪਏ ਦੀ ਅਮਰਤ ਜੋ ਕਰਦਾ ਦਿੱਤਾ। ਪ੍ਰਸਿੰਘ ਜੀ ਨੇ 1000 ਰੁਪਏ ਦੀ ਮਦਦ ਕੀਤੀ ਹੈ। ਸਰਗੁਨ ਜੀ 70 ਸਾਲ ਦੀ ਉਮਰ ਹੈ ਦਾ ਅੰਗਲ ਨਾ ਜਾ ਸਕੇ। ਕੋਈ ਨਹੀਂ ਕੋਈ ਵੀ ਅਮਰਤ ਦੇ ਸਕਦਾ ਹੈ ਨਹੀਂ ਸਮਝ ਸਕਦੇ। ਉਸੇ ਪ੍ਰਕਾਰ ਸੇ ਕਾਰਜਾ ਜੀ ਤੇ ਕਹੋਗੇ ਕਿ ਸੁਖੀਨ ਬਖਿਆਨ ਮੁਕਤ ਪਰ ਤੁਸੀਂ ਤੇ ਰਿਵੋ ਗਿਆਨ ਦੀ ਦਸਤਕੀ ਦੀ ਜੇ ਕੰਮ ਕਰਾਓ। ਕੋਈ ਪਰਦੇਸੇ ਵੀ ਦਿੱਦੀ। ਇਸ ਪ੍ਰਕਾਰ ਚਾਲ ਚੱਲਣ ਦੀ ਇਹ ਕਹਿੰਦੇ ਇਸੇ ਪ੍ਰਕਾਰ ਦੀ ਗੁੰਜਾਇਆਂ ਪੂਰਨ ਵਿਦਿਆਰਣਾਂ ਸਭੀ ਸੰਤੀ ਹੈ ਤੇ ਮਹਾਰਾਜ ਮੰਗਵਾ ਤੋਂ ਗੁੰਜਾਇਆਂ ਹੁਣ ਕਾਜੀ ਬਾਰੇ ਹੁਣ ਤੱਕ ਨਹੀਂ ਹੋਇਆ ਆਧੁਨਿਕ ਕਲਾਕਾਂ ਅੱਜ ਨੂੰ ਪਰਵਰੀ ਨੂੰ ਗ੍ਰੰਥ ਕਾਰਿਆਕਾਰ ਜਾਰਜ ਮੰਡਲ ਖੜੇ ਹੋਏ ਜੈਪਟਾ ਸਰਬੀਰ ਸਭੀ ਦੀ ਕਲੀਪਾਂ ਉਹ ਸੱਚਾ ਸੰਗ੍ਰਹਿ ਕਾਹਤ ਹਰ ਜਨਮ ਮਨਾਏ ਕਿਸ ਮੰਦੋ ਦੇ ਗੁੰਜਾਇ ਅਵਕਾਰ ਪਰ ਆਜੋ ਬੇਤੋ ਮਰਾਵ ਤਾਂ ਹਰ ਜਿਹੇ ਹਨ ਗ੍ਰੰਥਾ ਜੀ ਇਹ ਬੁੱਕ ਪ੍ਰਮਾਣਿਕੀਏ ਤਰ੍ਹਾਂੋਂ ਦੋ ਤਰ੍ਹਾਂ ਦੇ ਲੋਕੀ ਨੂੰ ਪ੍ਰਮਾਣਿੰਦਾ ਹੈ ਕਿ ਵਾਲੀ ਪ੍ਰਮਾਣ ਯਾਦਿਕ ਪ੍ਰਮਾਣ ਅਨੁਸਾਰ ਮਾਹਾਰਜ ਜਿਹੜਾ ਹੈ ਸਾਡੇ ਸਾਲ ਦੀ ਦੀ ਸਤਕਾਰ ਦਾ ਹੈ ਜਿੱਥੇ ਹੀ ਗੁਰੂ ਸਾਹਿਬ ਦੇ ਬੇਕਸ਼ਤੀਆਂ ਦੀ ਗੱਲ ਜਾਂਵੇ ਉਹ ਬੁਰਾ ਦਾ ਵਾਚਿਖਾ ਜਿਹਨੂੰ ਸੁਖਾਇਆ ਹੈ ਕਿ ਗੁਰੂ ਨਾਨਕ ਗੁਰੂ ਰੂਪ ਗੁਰੂ ਦੇਵ ਨੇ ਗੁਰੂ ਸਾਚਾ ਦਾਰਗੰਮੀ ਨੂੰ ਸਿਧਰ ਦੇਣੇ ਗੁਰੂ ਮਹਾਰਾਜ ਯਾਦਿਕ ਪ੍ਰਮਾਣ ਅਨੁਸਾਰ ਗੁਰੂ ਸਿੰਘ ਕਹਿੰਦੇ ਸਾਰੇ ਸਿਧਾਰ ਦੇ ਸਭ ਤੋਂ ਵੱਡਾ ਸਰਗਰਨਾਣਕ ਇਹਨਾਂ ਕਹਿੰਦੇ ਆਖੀ ਮੇਰੀ ਕਿਉ ਗੁਰੂ ਅਦਾਰਨ ਸਰ ਕੇ ਕਹਿੰਨ ਇਹ ਪ੍ਰਮਾਣ ਅਨੁਸਾਰ ਸੱਜਣ ਦੇ ਅਜੇ ਉਸ ਪ੍ਰਕਾਰ ਲੋਕਪਰਵਾਣ ਜਿਹੜਾ ਜਫਾਰ ਦੇ ਵਕਤ ਕੋਈ ਖੋਜੇ ਉਹਦੇ ਬੰਦਾ ਬੰਦੇ ਬਜਨ ਹੋਣ ਉਹ ਲੋਕਪਰਵਾਣ ਉਹ ਸੱਚ ਬੋਲਣ ਵਾਲੇ ਕੋਈ ਨਹੀਂ ਹੋਆ ਸੀ ਉਹਨੂੰ ਜੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਨ ਉਹ ਕਹਿੰਦੇ ਹਨ ਕਿ ਇਸੇ ਪ੍ਰਕਾਰ ਸੁਣੀ ਪੁਕਾਰ ਦੇ ਤਾਰਪੁਰ ਜਗ ਮਾ ਪਹੁੰਚਾਇਆ ਉਹ ਸਰਬੀ ਮਾਨ ਦੇ ਲਈ ਉਸੇ ਇੱਕ ਬਾਲਕਾਲ ਕਾਰਨ ਗੁਰਨਾਣ ਆਇਆ ਇਹ ਲੋਕਪਰਵਾਣ ਭਾਈ ਗੁਰਦਾਸ ਸਾਹਿਬ ਦਾ ਤੇ ਜਿਹਨੇ ਕਿਸਨ ਕੋ ਭੰਦੀਨ ਆਪਣੀ ਘਰ ਦਾ ਸਹਿ ਪ੍ਰਮਾਨ ਦੱਸਿਆ ਜਦਾਂ ਜਿਹੜਾ ਸਹੀ ਜਦੋਂ ਨਹੀਂ ਤਰਤੀ ਭਾਰ ਹੈ ਆਦਿ ਲੋਕਾਂ ਦੀ ਵੀ ਨਾਲ ਜਿਸੇ ਦਾ ਮਾਰਨਾ ਸੁਧਾ ਦੇ ਕੁਝ ਕਰਤੋਂ ਤੇ ਮਾਰੇ ਆਪ ਜਿਹੜੇ ਹੁੰਦੇ ਹਨ ਉਹ ਦੁਨੀਆ ਨੂੰ ਨੀਤ ਪਾਰਨੇ ਆਦਿ ਬਾਰ ਗਏ ਰਾਜੇ ਦਾ ਧਰਮ ਬੰਦ ਉਹਦੇ ਨਾਮ ਤੇ ਸਚੰਦਰੋਂ ਉਸੇ ਨਾਮ ਤੇ ਕੰਮ ਕਰਿਆ ਉਹ ਧਾਲ ਮੁਕੀ ਨਹੀਂ ਹੋਈ ਐ ਦੁਹਿਆ ਰਹਣਾ ਕੋਈ ਜਿਵੇਂ ਹਮੇ ਕਰਕੇ ਖਰੇਈ ਸਭ ਹੋਈ ਤੇ ਕੀਤੀ ਤਾਂ ਸਾਡਾ ਜਨੀਆਂ ਦੀ ਜਨਦੀ ਦੱਸਾ ਧੰਨਵਾਦ ਹੈ ਇਹ ਸਭ ਕੰਮ ਦੀ ਪ੍ਰਮਾਣ ਹਰ ਗ੍ਰੀਸ਼ ਦੇ ਆਉਣਗੇ ਗੁਰਬਾਣੀ ਅਨੁਸਾਰ ਵੀ ਭਾਈ ਗੁਰਦਾਸ ਸਾਹਿਬ ਦੇ ਜਦੋਂ ਅਨੁਸਾਰ ਵੀ ਅਤੇ ਵੇਦਾਨੀ ਅਸਰਕੀਆਂ ਅਨੁਸਾਰ ਵੀ ਉਹ ਵੀ ਮਾਰੇ ਹੋਏ ਦੇਖ ਪ੍ਰਮਾਣ ਇਹ ਲਾਉਂਦੀ ਪ੍ਰਮਾਣ ਜਾ ਰਿਹਾ ਹੈ ਅਵਕਾਸ ਗੋਲੋ ਦੀ ਜੀਵਨਤਾ ਨੂੰ ਇੱਕ ਪਸਵਾ ਦੇ ਦਾਰ ਕਰ ਰਿਹਾ ਹੈ ਤੀਜੇ ਪਰਸ ਨੂੰ ਉਸ ਪਰਸਨ ਦੀ ਵਾਦੂ ਜੀ ਬਾਂ ਮਾਰਗ ਨੂੰ 4 ਲੱਖ ਰੁਪਏ ਦਾ ਦਾਗਾ ਹੋਇਆ ਉਸ ਨੂੰ ਦੇ ਅੰਦਰ ਹੋਇਆ ਉਸ ਨੂੰ ਦੈਕਾਂ ਸਾਰੀ ਪੇਚ ਕਰਦੇ ਸੀ ਉਹਨਾਂ ਲੋਕਾਂ ਨੂੰ ਸਾਹਵੇਂ ਸਭ ਨੂੰ ਹਾਥ ਮੋਤਨਾ ਦੁਈਏ ਸੋਚਾ ਵੀ ਹੋਣ ਦਾ ਸਭ ਕੀ ਕੋਈ ਵੀ ਮੰਤਰ ਨੂੰ ਕੋਰੋਏ ਕੋਈ ਕੋਈ ਕਰੇ ਕਿਸ ਪ੍ਰਕਾਰ ਕਰੇ ਸਾਰਿਆਂ ਦੇ ਤਾਂ ਬੈਂਕਾਂ ਦਾ ਕੰਟਰੋਲ ਕਰਨ ਦਾ ਐਸਾ ਦਾਇਰਿਕ ਸਾਰਾ ਨਾ ਬੰਨ੍ਹਣਾ ਪੈ ਗੇ ਅਰ ਹੰਤਕ ਬਾਰ ਦੇ ਲਾਇਆ ਹੈ ਕਿ ਹਨ ਆਪ ਗੁਰੂ ਅਰਜਨ ਸਾਹਿਬ ਜੀ ਦਾ ਇੱਕੋ ਨਿਸ਼ਾਨ ਹੈ ਤਾਂ ਆਪਨ ਦੱਸਿਆ ਕਰੇ ਜਦ ਜਾਰਿਸ਼ਤ ਹੋਏ ਕਿਸ ਨਿਸ਼ਾਰਾ ਕਰਦੇ ਧੰਗ ਜਦੋਂ ਵੀ ਦੁਨੀਆ ਕੋਈ ਬਦਰ ਪਾਦਾ ਹੁੰਦੀ ਹੈ ਉਹਨਾਂ ਨੂੰ ਜੇਤੂ ਆ ਕੇ ਇਸੇ ਨੂੰ ਨਿਪਟਾਰਾ ਦੇ ਸੰਤੇ ਆਏ ਉਹਨਾਂ ਦੇ ਪਾਸੇ ਰੱਖਿਆ ਨਹੀਂ ਹੋ ਸਕਦੀ ਮਿਲਕ ਦੀ ਉਹੇ ਰੱਖਿਆ ਕਰਨ ਆ ਕੇ ਪਰਮੇਸ਼ਰ ਆਪ ਆਗਿਆ ਫਰਕੀਆਂ ਦੇ ਸੰਗਤ ਹੋ ਕੇ ਪਰਵਾਰਾ ਦੇ ਅਵਸਾਰ ਹੁੰਦੇ ਹੈ ਕੋ ਕਲਾ ਵਾਲੇ ਹੁੰਦੇ ਹਨ ਸਿਰ ਕਲਾ ਵੀ ਜਿਸੰਗੀ ਹੋਏ ਹਨ ਜੁਰਮ ਹਰ ਚਾਹੇ ਕੋਈ ਕਲਾ ਹੋਏ ਤੁਾਰੇ ਦਾ ਇਹ ਵੀ ਗਾਲੇ ਮਾਰਿਆ ਹੈ ਬੰਮੀ ਪਾਕਸਾ ਵੀ ਨਹੀਂ ਕੋ ਕਲਾ ਸੰਪੂਰਨ ਖੜਿਆ ਹੈ ਅਨੰਦ ਕਲਾ ਹੋਇ ਕਾਤੇ ਪੜਿਆ ਜੇ ਕੋਲਾ ਕਲਾ ਵਾਲੇ ਰੂਪ ਦੀ ਮੋੜ ਸੀ ਉਹਦਾ ਕੋਲਾ ਕਲਾ ਵਾਲਾ ਤ੍ਰੀਪਾ ਹੈ ਆਖੀ ਅਬ ਉਹਨਾਂ ਕੋਲਾ ਕਲਾ ਦਾ ਸਾਮੀਨ ਦੇ ਦਿੱਤੇ ਬੜਾ ਤੇ ਹੰਕ ਸੀ ਦੇਖ ਕਰਕੇ ਅਨੰਤ ਕਲਾ ਹੁਣ ਖਾਸ ਕਰਿਆ ਅਨੋਖੇ ਸੱਜਣਿਆ ਦੇ ਮਾਲਕੋ ਕੇ ਸਾਹਰ ਪਰ ਮਿੰਨਾਰ ਨੂੰ ਕੋ ਕੇ ਚੰਦਰਾ ਨਾਮ ਨਾ ਸਾਥੇ ਜੋ ਕਰੀ ਤੋ ਕਦ ਹੋਏਗੀ ਉਸ ਪ੍ਰਕਾਰ ਮਾਰੇ ਉਹਨਾਂ ਵਿਖੜਦੀਆਂ ਦੇ ਮਾਲਕ ਹੋਏਗਾ